ਅਭ ਕੱਢ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਕਿਸ ਕੋ ਨਮਸਕਾਰ ਸਭ ਕੱਢ ਤਿਸਕੇ ਸਾਰੇ ਹਿਰਦਿਆਂ ਦੇ ਵਿੱਚ ਉਹ ਆ ਬੈਠਾ ਦੇਖਦੇ ਹਿਰਦੇ ਵਿੱਚ ਵੀ ਹੈ ਹਬੜ ਤਿਸਕੇ ਹਾਂ ਸੰਤ ਕੇ ਦੋਖੀ ਦੇ ਹਿਰਦੇ ਵਿੱਚ ਵੀ ਹੈ ਪਰ ਸੰਤ ਦਾ ਦੋਖੀ ਜਿਹੜਾ ਹੈਗਾ ਉਹਦਾ ਜਿਹੜਾ ਮਾਨਾ ਬਾਗੀਆ ਮਵਾਸੀ ਉਹ ਮਵਾਸ਼ੀ ਰਾਜਾ ਬੜਾ ਹੰਕਾਰੀ ਆ ਉਹ ਜਿੰਦਗਰ ਜਿਹੜਾ ਸੰਤ ਕਾ ਲੋਕੀ ਆ ਸੰਤ ਕਾ ਜਿੰਦਗਰ ਸੰਤ ਕਾ ਲੋਕੀ ਆ ਹੈ ਉਹਦੇ ਵੀ ਅੰਦਰ ਪਰ ਉਹਦਾ ਮਾਨ ਇੰਨਾ ਜਿਆਦਾ ਪ੍ਰਵਲ ਭਕਾਰੀਆ ਪ੍ਰਵਲ ਹੰਕਾਰੀਆ ਹੈ ਹੰਕਾਰੀ ਕਿਉਂ ਹੰਕਾਰੀ ਹੈ ਕਿ ਉਹ ਜਿਹੜੀ ਆਤਮਾ ਦੀ ਆਵਾਜ਼ ਨੂੰ ਕੁਚਲ ਕੇ ਰੱਖ ਦਿੰਦਾ ਉਹ ਆਤਮਾ ਦੀ ਆਵਾਜ਼ ਨੂੰ ਕੁਚਲ ਸੱਚ ਦੀ ਆਵਾਜ਼ ਨੂੰ ਕੁਝਣਾ ਹੋਣਾ ਪਵੇ ਜਿਹਦੇ ਆਪਣੇ ਅੰਦਰ ਸੱਚ ਦੀ ਆਵਾਜ਼ ਗੁਜਰਦੀ ਉਹ ਬਾਹਰ ਵਾਲੇ ਸੱਚ ਨੂੰ ਕਿਵੇਂ ਬਰਦਾਸ਼ਤ ਕਰੂਗਾ ਜਦੋਂ ਗੁਰੂ ਘਰਿਆ ਭਗਤਾਂ ਨੇ ਜਦੋਂ ਵੀ ਸਦਾ ਪ੍ਰਚਾਰ ਕੀਤਾ ਜਿਹੜੇ ਸੋਕਾਰ ਗੁਰੂ ਬਣੇ ਹੋਏ ਤੇ ਧਰਮ ਦਾ ਪ੍ਰਚਾਰ ਰਲ ਜਿਹੜਾ ਗੁਰੂ ਨੂੰ ਤੁਸੀਂ ਉਹਨਾਂ ਤੋਂ ਖੁਸ਼ੀ ਹੋ ਤਾਂ ਰਲ ਗਏ ਉਹ ਸੱਚ ਦੇ ਅਪਣਾ ਲਿਆ ਜਿਹੜੇ ਦੂਏ ਤਾਂ ਵਿਰੋਧ ਚ ਲੱਕ ਪਾ ਕੇ ਵਿਰੋਧ ਚ ਵੀ ਖੜੇ ਹੋ ਗਏ ਜਿਹੜੇ ਵਿਰੋਧ ਚ ਖੜੇ ਹੋਏ ਨੋ ਉਹ ਸੱਚ ਦੇ ਦੋਖੀ ਔਰ ਸੱਚ ਦੇ ਨਿੰਦਕ ਹੋਏ ਉਹਨਾਂ ਦੀ ਗੱਲ ਹੈ ਬਿਲੇ ਬਿਲੇ ਸੱਚਾ ਵੀ ਹੈ ਸੱਚ ਦੇ ਨਿੰਦਰ ਸੱਚ ਦੇ ਦੋਖੀ ਵੀ ਹੋਏ ਇਤਨਾ ਕਾਲਾਂ ਜੇ ਬਾਣੀ ਸੱਚ ਹੈ। ਇੱਕ ਤੇ ਉਸ ਵੇਲੇ ਦੀ ਗੱਲ ਨਹੀਂ ਉਸ ਵੇਲੇ ਵੀ ਸੀ। ਕਿਸੋ ਬੋਲੇ ਜੋ ਦੇਖੇ ਔਖੀ ਉਸ ਵੇਲੇ ਕੌਣ ਕਰ ਰਹੀ ਸੀ। ਕਬੀਰ ਵੇਲੇ ਪੰਡਤ ਨਹੀਂ ਕੀਤਾ ਹੋਊਗਾ ਕੀਤਾ ਸੀ। ਅੱਜ ਵੇਲੇ ਪੰਡਤ ਦੇ ਡਾਇਰੈਕਟਰ ਕਰਦਾ ਸੀ ਜੋਗੀਆਂ ਦੇ ਡਾਇਰੈਕਟਰ ਕਰਦਾ ਸੀ ਜੋ ਵੀ ਕਰਦਾ ਸੀ ਉਹ ਤੇ ਖਲਾਫ ਉਹਦੇ ਖਲਾਫ ਪੰਡਤ ਲੱਗੇ ਰਹੇ ਆਪਣੇ ਲੈਵਲ ਤੇ ਗੁਰਦਾਨਾ ਨੂੰ ਇਹ ਨੂੰ ਪ੍ਰਚਾਰ ਬਿਲਕੁਲ ਸੱਚ ਦਾ ਖਤਮ ਸੀ ਜਿਵੇਂ ਅੱਜ ਖਤਮ ਹੋ ਬਾਣੀ ਹੈਗੀ ਪ੍ਰਚਾਰ ਨਹੀਂ ਹੈ ਐ ਜਾਈ ਸੀ ਗੁਰਦਾਨਾ ਨੇ ਥੇਰ ਸਮਝ ਕੇ ਗੱਲ ਨੂੰ ਥੇਲੀ ਤੇ ਰੰਦੀ ਗਈ ਤਾਂ ਦੱਸ ਪਾਜਾ ਕਹਿੰਦੇ ਨੇ ਪ੍ਰਥਮ ਭਗਵਤੀ ਸੰਚਾਰ ਗੁਰਦਾਨ ਘ ਲਈ ਤੇ ਆਏ ਇਹ ਗੁਰਦਾਨ ਅਖੇ ਤੇ ਅੱਜਾਈ ਗੁਰਮਤ ਅਸਲੀਆ ਗੱਲਾਂ ਹੈ सच्ची वत गुरु मंत्र पर प्रगति किए भैरव भुजा अधिवाज गरे रे कहलो दीवा का कह था गुरु माता सी वाणी का सी भक्ता दी लैड नहीं सी दे रही दीवा झगड़ा कीता जगाया लैड देण लगी अर्थ उन अर्था ने अर्थ की अनर्थ करके वाणी नु पछ्या गए ते अर्थक ਜਦੋਂ ਲੋਕ ਚੋ ਗਿਆਨ ਰੋਸ਼ਨੀ ਤੇ ਲਾ ਕੇ ਉਹ ਅਰਥੇ ਰੋਸ਼ਨੀ ਦਿੰਦੇ ਨੇ ਅਰਥੇ ਦੀਵਾ ਜਗਦਾ ਅਨਰਥ ਨਾਲ ਦੀਵਾ ਬੁਝ ਜਾਂਦਾ ਜੇ ਅਰਥ ਅਤੇ ਅਨਰਥ ਕਰਦੀਏ ਜੋ ਗਿਆਨ ਹੁੰਦਾ ਉਲਕਤ ਹੋ ਜਾਂਦਾ ਅਸਲ ਗਿਆਨ ਜੇ ਅਰਥ ਸਹੀ ਹੋਣਾ ਅਸਲ ਗਿਆਨ ਪਰ ਹੋ ਜਾਂਦਾ ਆ ਹੀ ਕੁਝ ਹੁੰਦਾ ਇਹਨਾਂ ਹੋਰ ਕੁਝ ਨਹੀਂ ਹੁੰਦਾ ਅੱਲਾਹ ਹੀ ਹੁੰਦਾ ਆ ਬੇਦਾ ਦੇ ਲੈ ਕੇ ਉਹ ਕਬੀਰ ਕਹਿੰਦਾ ਪੰਡਤ ਪਾੜੀ ਬਾਟ ਉਹ ਹੀ ਵੱਲ ਇਹ ਵਿਦਵਾਨ ਪੰਡਤ ਗੋੜ-ਗੋੜ ਲੈਦੇ ਆਪਣੀ ਜਗਦਰ ਵਾਸਤੇ ਉਹ ਇਹਦੇ ਚ 6 ਪਹਿਲੇ ਪਦੇ ਜਿਹੜੇ ਅਸ਼ਟਪਦੀ ਰੋ 6 ਪਦਿਆਂ ਦੇ ਵਿੱਚ ਸੰਤ ਕਾ ਦੋਖੀ ਆ ਸੰਤ ਕਾ ਕੋਈ ਆਦਮੀ ਦੇ ਦੋਏ ਰੋ ਸੰਤ ਕਾ ਦੋਖੀ ਕਿਦਰ ਤਾਂ ਆਏ ਕੋਈ ਕੰਮ ਕਰਦਾ ਹੋਵੇ ਆਪਾਂ ਕੋਈ ਕੰਮ ਕਰਦੇ ਹਾਂ ਗਿਆਨਾ ਹੁੰਦਾ ਔਰ ਚਾਰ ਚੀਜ਼ਾਂ ਵਿਗਾੜ ਜਾਂਦਾ ਬਣੀਆ ਜੇ ਕੋਈ ਮਾਇਆ ਤੋਂ ਕੋਈ ਵੀ ਉਹ ਗਿਆਨ ਆ ਉਹ ਪਾ ਕੇ ਉਹ ਵਤਵਤ ਹੋ ਕੇ ਕਣਕ ਬਾਹਰ ਪਾਈ ਆ ਉਹਨੇ ਗਿਆਨ ਕੋ ਸੁਣਾ ਦੇਵੇ ਉਹ ਫਿਰ ਚੁੱਕ ਜਾਵੇ ਉਹ ਫਿਰ ਕੋਈ ਸੁਣਾ ਦੇਵੇ ਉਹ ਉਹ ਨੂੰ ਕਹੇ ਦੁਸ਼ਮਣ ਕੋ ਜੋ ਖੁਦ ਨੂੰ ਦੁਖੀ ਨਹੀਂ ਲੱਗੂਆ ਜੇ ਤਾਂ ਕੰਮ ਖਰਾਬ ਕਰੂ ਹੋ। ਖੜੀ ਗਾਣੇ ਦੇ ਵੀ ਇਹ ਗੱਲ। ਆਟਾ ਉਸ ਕੌਣ ਤੇ ਵਿਹਣੀ ਹੈ। ਜੇ ਉਹ ਜਿੱ ਮਿੱਟੀ ਕਰਕੇ ਲੜੂਗੇ ਤਾਂ ਸਾਤਾ ਵੀ ਪਰ ਉਹ ਨੂੰ ਇੰਨੀ ਅਕਲ ਕਿੱਥੇ? ਅਗਲੇ ਨੂੰ ਕਾਉਂਦੇ। ਇਸ ਕਰਕੇ ਜੇ ਸੱਚ ਪ੍ਰਗਟ ਹੋ ਖਾਣ ਉਹ ਸਾਰੇ ਨਹੀਂ ਹੈ ਫਰੰਗ ਦਾ ਸਭ ਨਹੀਂ ਹੈ। ਪਰ ਅਗਲੇ ਤੋਂ ਥੋੜੇ ਹੋਏ ਲੋਕਾਂ। ਇਹਨਾਂ ਨੂੰ ਮੂਰਖ ਤਾਂ ਕਿਹਾ ਹੋਇਆ ਹੈ ਮੂੜ ਮੂੜ ਮੱਤੋ ਮੂੜ ਮੱਤ ਤਾਂ ਕਿਹਾ ਹੈ ਉਹ ਰਿੰਦੋ ਹਕੀ ਨੇ ਉਹ ਇਹ ਨਿਆਣਾ ਮੂਰਖ ਹੋਇਆ ਮੂਰਖ ਸੰਤ ਦਾ ਦੋਖੀ ਜਿਹੜਾ ਹੈਗਾ ਜਿਹੜਾ ਸੰਤ ਕੰਮ ਕਰਨ ਲੱਗਿਆ ਸੰਤ ਦਾ ਕੀ ਪਲਾਨ ਹੈ ਪਰਮੇਸ਼ਰ ਦਾ ਤੇ ਆਹ ਸ੍ਰਿਸ਼ਟੀ ਦਾ ਕਰਕੇ ਆ ਜਿਹੜੇ ਜੀਵ ਨੇ ਭਵ ਸਗਦੇ ਬਾਹਰ ਕੱਢੀ ਫਿਰ ਇਹ ਤਾਂ ਉਹ ਮੜਾ ਦੀ ਉਹ ਕਹਾਵਾ ਸਹੀ ਹੈ ਸਾਡੇ ਵਾਸਤੇ ਹੀ ਹੈ ਉਹ ਜਿਹੜਾ ਵਿਗੜ ਪਾਊਗਾ ਇਸ ਕੰਮ 'ਚ ਉਹ ਕੀ ਪਰਮਿਸ਼ਨ ਚੰਗਾ ਲੱਗੂ ਪਰਮਿਸ਼ਨ ਦਾ ਦੋਖੀ ਹੈ ਜਾਂ ਇਹਦਾ ਹੋ ਗਿਆ ਪਰ ਇਸ ਪੱਖੋਂ ਤਾਂ ਪਰਮਿਸ਼ਨ ਦਾ ਦੋਖੀ ਹੈ ਪ੍ਰੋਬਲਮ ਪੈਦਾ ਕਰਦਾ ਉਹਦੇ ਕੰਮ ਦੇ ਵਿੱਚ ਉਹਦੇ ਪਲਾਨ ਦੇ ਵਿੱਚ ਵਿਗੜ ਪੈਦਾ ਕਰਦਾ ਨਾ इस करके का दुख होया उन धोखी है तो फिगर पैदा करता है जो कल वो दसदा है अंतरात्मा भी उनको जंदा है वो दा विरोध करदा बचपत बचपतई जो पेड़ पौधे तो है आदमी ने आगे रखा बात आदमी जगह में जाके संत का धोखी और किसे जन्म जगह संत का धोखी नहीं है वेदे आगे हमदारी है ਇਥੇ ਆ ਵੀ ਦਦਕ ਕੋਈ ਔਗਰ ਨਹੀਂ ਹੋਲ ਕਿਸੇ ਜਾਨਵਰ ਅਕੀ ਦਦਕ ਦਾ ਕਾਰਜ ਕੁਛ ਨਹੀਂ ਹੈ ਪਰਮ ਪਰਮ ਨੂੰ ਲਗਾ ਦੋ ਗਿਆਨ ਲੈ ਕੇ ਚਲੇ ਹੋ ਗਿਆਨ ਦਾ ਦੀਵਾ ਜਗਦੇ ਹੋਣਾ ਇਹ ਸੰਤ ਕਾ ਦੁਖੀ ਵੀ ਹੈ ਫਿਰ ਦੂਜੀ ਗੱਲ ਹੋਰ ਕਰਦਾ ਸੰਤ ਕਾ ਜਿੰਦਕ ਵੀ ਹੈ ਜੇ ਦਦਿਆ ਨਹੀਂ ਕਰਦਾ ਸੱਚ ਤੋਂ ਅਲੱਗ ਕਿਸਮ ਦੀ ਸੱਚ ਦੀ ਦੇ ਅਰਥਾਂ ਨੂੰ ਅਨਰਥ ਕਰਕੇ ਵੀ ਇਹ ਕਰਦਾ ਤਾਂ ਇਹ ਆ ਆਪ ਜਾਂਦਾ ਜੋ ਅਨਰਥ ਕਰਦਾ ਕਰਦੇ ਪੈਂਦੇ ਨੇ ਅਨਰਥ ਕਰਨੇ ਵਾਸਤੇ ਆਪਣੀ ਇੱਜ਼ਤ ਬਚਾ ਕੇ ਰੱਖਦਾ ਜੇ ਅਨਰਥ ਕਰਨੀ ਸ਼ੁਰੂ ਉਹ ਆਪਣੀ ਇੱਜ਼ਤ ਹੀ ਵੇਚਦੀ ਤੇ ਲੜਾਈ ਲੜਦਾ ਹੈ ਬੱਚਾ ਸੁੱਧੀ ਲੜਾਈ ਲਾਉਂਦਾ ਹੈ ਆਪਣੇ ਵੀ ਗੁਰੂ ਪਰ ਜਿਹੜਾ ਕਹਿੰਦਾ ਪਰਮੇਸ਼ਰ ਗੁਰੂ ਹੈ ਉਹ ਕਹਿੰਦਾ ਗੁਰੂ ਭਈਆ ਬੰਮੜ ਗੁਰੂ ਹੈ ਜਦ ਤੱਕ ਬੰਮੜ ਤਾਂ ਕਹਿੰਦਾ ਗੁਰੂ ਭਈਆ ਜੋਗੀ ਤਾਂ ਕਹਿੰਦਾ ਗੁਰੂ ਮਾਇਆ ਨਾਨਕ ਕਹਿੰਦਾ ਕਿ ਬਦਕੰਨ ਨੇ ਅਸੀਂ ਤਾਂ ਗੁਰੂ ਹੈ ਨਹੀਂ ਉਹ ਤਾਂ ਪਰਮੇਸ਼ਰ ਹੈ ਸ਼ਬਦ ਗੁਰੂ ਹੈ ਹਾਂ ਹਾਂ ਤੁਸੀਂ ਸ਼ਬਦ ਨੂੰ ਗੁਰੂ ਸਾਡੇ ਕਹਿੰਦੇ ਹੋ ਮੈਨੂੰ ਕਹ ਕੇ ਨਿਮੰਦ ਦੇ ਦੁਨੀਆ ਮੰਦਈਏ ਇਸ ਗੱਲ ਦਾ ਬੋਧ ਕਰਦਾ ਹੋ ਅਸੱਚਾ ਆਪਣੇ ਜੋ ਖਿਲਾਫ ਉਹਦਾ ਹੈ ਸੱਚ ਵੀ ਹੋ ਉਹਦੇ ਖਿਲਾਫ ਵੀ ਹੋਈ ਹੈ ਨਾ ਜਿੰਦ ਦੇ ਜੋ ਫਰਮਾਨ ਗਰਗਾਦਾ ਹੈ ਉਸ ਹਾਈਲਾਈਟ ਨਾ ਹੋ ਜਵੇ ਇਹਦਾ ਵਿਰੋਧ ਤਾਂ ਕਰ ਹੁਕਮ ਦਾ ਵਿਰੋਧ ਕਰਦਾ ਗੁਰੂ ਬਣਿਆ ਆਹੀ ਹੋਮੇ ਨੇ ਗੁਰੂ ਬਣਿਆ ਹੋਮੇ ਲੋਹੇ ਉਹ ਤਾਂ ਬੜੀ ਅਮਕੀਆ ਇਹ ਰਾਜਾ ਹੈ ਗੁਰੂ ਗੁਰੂ ਦਾ ਬੜਾ ਹੁੰਦਾ ਹੀ ਤੋਲ ਉਹੀ ਗੁਰੂ ਜਿਹੜਾ ਪਖਾਊਗਾ ਅਗਿਆਨੇ ਹੁੰਦਾ ਉਹੀ ਹੈ ਗੁਰੂ ਸਦਾ ਨਾ ਗੁਰੂ ਬਾਹਰ ਹੈ ਉਹ ਤਾਂ ਗੁਰੂ ਬਾਹਰ ਹੈ ਇਹ ਤੋਂ ਬੜਾ ਤਾਂ ਕੋਈ ਕਰਦੀ ਹੈ ਸਾਡੇ ਨੂੰ ਨਾ ਵਿਰੋਧ ਕਰਨ ਦੇ ਪੰਡਿਤ ਜੀ ਹਾਂ ਹਾਂ ਪੰਡਿਤ ਉਹਨਾਂ ਸਾਰਾ ਸਵਾਲਾਂ ਦੇ ਜਵਾਬ ਦੇਣ ਲੱਗਾ ਇਹ ਜਿਹੜੇ ਮਾਇਆ ਦੇ ਨੇ ਜਿਹੜੇ ਦੇਣੇ ਨਹੀਂ ਹੈ ਜਿਹੜਾ ਵਿਸ਼ਾ ਹੀ ਨਹੀਂ ਹੈ ਉਹ ਜਦ ਫਿਰੜ ਲਿਆ ਸਤ ਕਾ ਨੰਦਕ ਉਦੋਂ ਵੀ ਸੀ ਅੱਜ ਵੀ ਨੇ ਉਦੋਂ ਪਹਿਲਾਂ ਵੀ ਸੀ ਤੇ ਰਹਿਣਗੇ ਵੀ भी ਨਹੀਂ ਵੀ ਹਟ ਜਾਣਗੇ ਹਾਂ ਕਦੇ ਦਬ ਜਾਂਦੇ ਨੇ ਉਹ ਸੰਤ ਕੇ ਨਿੰਦਕਰ ਸੰਤ ਕੇ ਦੋਖੀ ਦੇ ਜਿਹੜੇ 5 ਲੱਖ ਰਾਜਾ ਕੈਦ ਕੀਤਾ ਸੀ ਬਾਸਨਾਸ ਨੇ ਤਾਂ ਕਹਿੰਦਾ ਸਰਦੀ ਬਲੀ ਦੇਣੀ ਪੰਡਤ ਨੇ ਕਿਹਾ ਸੀ ਬ੍ਰਾਹਮਣ ਨੇ ਗਿਆ ਜੇ ਵੀ ਰਾਂਧੀ ਬਲੀ ਦੇ ਦੇ ਇਹ ਬਲੀ ਦੇਣਾ ਜਾਇਜ਼ ਹੈ ਵਧੀਆ ਹੈ ਇਹਨਾਂ ਦਾ ਆਧਾਰ ਹੋ ਜੇ ਕਾਤ ਕਰਦੇ ਤੇ ਇਹਨਾਂ ਦਾ ਇਹਨਾਂ ਕੋਲ ਬਣਣਾ ਅਗਲੇ ਜਨਮ ਜਿੱਦਾਂ ਭਾਵੇਂ ਮਾਨੀ ਹੁਣ ਜਾ ਕੇ ਇਹ ਜਨਮཅੇ ਨਹੀਂ ਮੰਨਦੇ ਤਾਂ ਬਲੀ ਦੇ ਦੇ ਸਮਝੋ ਕਿਉਂ ਇਹਨਾਂ ਨੇ ਆ ਬਲੀ ਦੇਣੀ ਇਹਨਾਂ ਦੀ ਜਾਇਜ਼ ਲਿਖੀ ਹੈ ਰੇਤ ਵਿੱਚ ਵੀ ਜਿਹੜਾ ਇਹਨਾਂ ਦੀ ਸਾਰਿਆਂ ਦੀ ਬਲੀ ਦੇ ਦੇ ਵਿੱਚ ਫੜ ਕੇ ਇਹਨਾਂ ਦੀ ਬਲੀ ਦੇਣੀ ਵੀ ਜਾਇਜ਼ ਹੈ ਪਰ ਆ ਜਿਹੜੇ ਪਸੰਦੂਪੇ ਦੇ ਦਸੰਭਾਸ਼ਾ ਨੇ ਜੁਦੇ ਬਲੀ ਦਿੱਤੀ ਉਹੀ ਸੀ ਹੱਥ ਕਰ ਨਾਲ ਹੋਰ ਕੀ ਦੀ ਉਹ ਬਾਕੀ ਗੱਲ ਗਲਤ ਹੈ ਉਹ ਸਾਰੀ ਉਹ ਜੋ ਸਾਨੂੰ ਉਥੇ ਗੱਲ ਆਈ ਹੈ ਨਾ ਸਖੀ ਉਹ ਵੀ ਠੀਕ ਹੈ ਕਿ ਸਰੂ ਬਿਲਕੁਲ ਠੀਕ ਹਾਂ ਪਸੰਦ ਆਈ ਇਹਦੀ ਗੱਲ ਦੇ ਵਿੱਚ ਨਹੀਂ ਇਹ ਮਤਲਬ ਇਹ ਜੀ ਸਜ਼ਾ ਦਿੱਤੀ ਜਾ ਸਕਦੀ ਕੀ ਕਰੂ ਦਸਮ ਪਾਸ਼ਾ ਦਾ ਇੱਥੋਂ ਉੱਥੇ ਰੱਖ ਦਿੱ ਗਏ ਹਾਂਜੀ ਚੋਬਾਂ ਨਹੀਂ ਰੱਤੇ ਹਾਂਜੀ ਚੋਬੇ ਗਏ ਭਾਜੀਏ ਜੀ ਨਹੀਂ ਗਏ ਤੇ ਜਿਹੜੇ ਇਹ ਸੀ ਪੱਲੇ ਕੋਹਾੜ ਇਲਾਕੇ ਦੇ ਸਿੱਖ ਇਹਨਾਂ ਦੇ ਬਣੇ ਹੋਏ ਜਬ ਉਹਨਾਂ ਅੰਗਰੇਜ਼ੀ ਪੜ੍ਹ ਰਹੇ ਨੇ ਪਹਿਲਾਂ ਜਦ ਮਾਝੇ ਜਦ ਅੰਬਰਸਰ ਦੇ ਗੇਟ ਤੇ ਰਹੇ ਜੰਗੂਰੂ ਪੱਲੇ ਪਾਸੇ ਵੀ ਤਾਂ ਸਿੱਖ ਸੀ ਹੁਣ ਘਾਟਦੇ ਆਏ ਨਹੀਂ ਹੋਏ ਸਿੱਖਾਏ ਘਾਟਦੇ ਬੰਦੂ ਘਾਟਦੇ ਏਰੀਏ ਦੇ ਸਿੱਖ ਸੀ ਸਾਰੇ ਸਿੰਧ ਵਿੱਚ ਸਿੰਧ ਦਾ ਜਲਵਾ ਇਦਾਂ ਰਹੇ ਉੱਪਰ ਵੀ ਕਾਬਲਤਾ ਕਸੇ ਇਹ ਜਿਹੜੇ ਸਿੱਖ ਸੀ ਇਹ ਸਿੱਖਾਂ ਦੇ ਉਹੋ ਲੈ ਕੇ ਆਉਂਦੇ ਤੇ ਕਰਦੇ ਆਪਣੇ ਸੀ ਕਰਦੇ ਲਾਹੌਰ ਵਾਲੇ ਰਾਜੇ ਨਾਲ ਛੇ ਵਾਰ ちゃっ ਲੱਗੀ ਜੰਗ ਹੋਈ ਹੋਈ ਸੀ ਇਹ ਆਪ ਨੇ ਗੁਰੂ ਘਰ ਗਏ ਹੀ ਨਹੀਂ ਬੱਜੇ ਪਰ ਇਹ ਗੁਰੂ ਦੇ ਨਾ ਹੋਤੇ ਪ੍ਰਚਾਰ ਵੀ ਕਰਦੇ ਕਰਦੇ ਪਤਾ ਲੱਗਾ ਪ੍ਰਚਾਰ ਰੋਟਾ ਕਰੂਗਾ ਕੇ ਸੀ ਛੇ ਰੰਗ ਲੱਗੇ ਰਹੋ ਇਹਨਾਂ ਨਾਲ ਗਏ ਪੜ੍ਹਦਾਨਣ ਰਲ ਗਏ ਪ੍ਰਚਾਰ ਦੇ ਬਦਲਾ ਉਪਾਖ ਅਰ ਵਿਸ਼ੇਵੀਅਰ ਮਤਲਬ ਆ ਪਹਿਣਾ ਬਿਹੇਵੀਅਰ ਕਰਨਾ ਗਿਆ ਸਿੱਖ ਸਿੱਖ ਸਮਝਣਾ ਹਾਂ ਉਹ ਪਤਾ ਲੱਗਿਆ ਫੇਰੇ ਕੀ ਤਰਹੀ ਨਾ ਇਹ ਇਹ ਜਿਹੜੇ ਲੋਕ ਹੁੰਦੇ ਨੇ ਸਭ ਤੋਂ ਜ਼ਿਆਦਾ ਬਰਦੀ ਨੇ ਜਿਹਦਾ ਸਪਾਸ ਨੇ ਕਿਹਾ ਕਿ ਧਰਮ ਚ संतो बाघो दुष्ट सबन को मूल ओ पार एक ही है कोई गल कही है जे मेरा बस चले इनों दी सारेया दी बलि दे दे चलो <twillisa> आ मूल मूल जड़ा पुट जड़ा पुट के समुंदर च मार ओ पारसनाथ हैव ने लिख के गए बतात रहेव ने लिख के गंगा जहंदी है ਸੱਚ ਪ੍ਰਗਟ ਕੀਤਾ ਪਹਿਲੀ ਵਾਰ ਜਿਨ੍ਹਾਂ ਨੇ ਬਾਦ ਦੇ ਵਿੱਚ ਇੱਕ ਅਰਥ ਕੀਤੇ ਉਹ ਅਰਥਾਂ ਦੇ ਆਗੇ ਫੇਰ ਦੁਆ ਆ ਉਹਨੇ ਅਰਥ ਕੀਤੇ ਨੇ ਅਰਥ ਕਰਨ ਵਾਲੇ ਹੀ ਫੜੇ ਨੇ ਪਰਸਨਾਥ ਨੇ ਬੜੇ ਉਹ ਨੇ ਜਿਹੜੇ ਬੰਦੇ ਨਹੀਂ ਸੀ ਜਿਹੜੇ ਬਣ ਗਏ ਸੀ ਜਿਹੜੇ ਪਹਿਲੇ ਬੰਦੇ ਸੀ ਉਸ ਕਰੋ ਜਿਹੜੇ ਪਤਾ ਲੱਗਦਾ ਅਸੀਂ ਬਈ ਮੂਹ ਤੇ ਬਣਦੇ ਨੇ ਪਿੱਛੋਂ ਨਹੀਂ ਨਾ ਬਣਦੇ ਉਹ ਬੜੇ ਸੀ ਸਾਰੇ ਮੇਰਾ ਨੇ ਇਹ ਦਮਨ ਲੋ ਛੱਡਿਆ ਕਿਉਂ ਉਹ ਕਹਿੰਦੇ ਹੁਕਮ ਹੈ ਹੋਇਆ ਬਈ ਨਹੀਂ ਇਹ ਤਰੀਕਾ ਨਹੀਂ ਹੈ ਨੇ ਕਿਹਾ ਉਹਨੂੰ ਪਾੜਨਾ ਹਾਂ ਕਾਹ ਨੂੰ ਓਹਨ ਦਾ ਨਾ ਗੱਲ ਆ ਜਿੰਦਨ ਰਾਨੁਂ ਬਿਹੇ ਦੇ ਸਨ ਉਹ ਤਾਂ ਅੰਦਰੋਂ ਪਰਗਟ ਹੋਇਆ ਨਾ ਸ਼ਬਦ ਗੁਰੂ ਉਹ ਬੱਚੀ ਦੇ ਪੇਟ 'ਚ ਕਿੱਥੇ ਅਦੋਈ ਪਰਗਟ ਹੋਇਆ ਜਿਉਂ ਜਲ ਛੋੜ ਬਾਹਰ ਤੇ ਪੂਰਬ ਜਦ ਮੋ ਤਪ ਗਤ ਮੋਰੀ ਤਜਿਲੇ ਬਨਾ ਰਸਤ ਬਦ ਪਈ ਥੋੜੀ ਹੀ ਮੈਨ ਤੋ ਤੋ ਜਿਵੇਂ ਬਾਜ ਸੀ ਇਹ ਗੱਲਾਂ ਦਾ ਸਾਖੀਆਂ ਬਣਾਉਂਦੇ ਨੇ ਲੋਕ ਗ੍ਰੰਥਮੋਂ ਦੇ ਨੇ ਫਿਰ ਇਹਦਾ ਦਾਸ ਬਣੂਣੋਂ ਕਹਿੰਦਾ ਸੰਬਤ ਵਾਸਤੇ ਪੜ੍ਹ ਸੁਣਨ ਵਾਸਤੇ ਇਹਦਾ ਕਵੀਆਂ ਦਾ ਦਾਸ ਹੁੰਦਾ ਵਿੱਚ ਬੁੱਝਣ ਦੀ ਗੱਲ ਫੇਰ ਪਈ ਉੱਥੇ ਬੁੱਝਣ ਦੀ ਗੱਲ ਉੱਥੇ ਪਈ ਹੈ ਕਿਉਂਕਿ ਪਾਛਾ ਦੀ ਗੱਲ ਦੀ ਇਹਨਾਂ ਵੀ ਅਲਕੋਜ਼ ਹੋ ਰਿਹਾ ਤਾਂ ਇਹ ਆਪਾਂ ਕਹਿੰਦੇ ਨੇ ਵੀ ਇੱਥੇ ਤਾਂ ਗੱਲ ਬਣਦੀ ਹੋਈ ਗੱਲ ਇਹੀ ਹੁੰਦੀ ਹੈ ਉਹ ਜਿਹੜੇ ਨਹੀਂ ਸੀ ਮੰਨਦੇ ਉਹ ਫੜੇ ਸੀ ਇਹ ਕਲਕੀ ਉਹਦਾਰ ਤਾਂ ਗਹਿਣ ਲੱਗੇ ਸੀ ਸ੍ਰੀ ਬਾਸ਼ਾ ਨੂੰ ਉਹ ਜਿਹੜਾ ਹੋਣੇ ਇਹ ਆ ਗਿਆ ਇਹ ਛੱਡੂ ਨਹੀਂ ਹੁਣ ਕਿਸੇ ਦਾ ਤਰਕਾ ਚਿਤ ਤਰੰਗ ਖਪਾਵਾਂਗੇ ਇਹ ਜੀ ਉਹ ਕੀ ਹੈ ਉਹ ਇਹਨ ਖਪਾਵਾਂਗੇ ਸਮਝ ਲੈ ਸਮਝ ਗਏ ਉਹ ਨਹੀਂ ਸਮਝਿਆ ਵੀ ਇਹ ਤਾਂ ਹਟਾਤਾ ਸੀ ਬਾੜ ਸਨਾ ਦੇ ਬਾੜ ਨਿਕਲਵਾ ਦੇ ਇਸਤੇਮਾਲ ਨਹੀਂ ਕਰਨਾ ਪਰ ਵੈਸਾ ਗੱਜਾ ਸੀ ਜੇ ਹਮ ਸੜਕ ਤੇ ਇਸਤੇਮਾਲ ਕਰਨਾ ਆਪਣੇ ਬਾਲੀ ਕਲਵਾਰ ਦਾ ਉਹਦੇ ਨਾਲ ਇਸਤੇਮਾਲ ਕਰਨਾ ਜਿਹੜਾ ਚੜ ਕੇ ਆਵੇ ਜਿਹਨੂੰ ਫੜ ਲਈਏ ਕਾਬੂ ਕਰ ਲਈਏ ਫੇਰ ਬਾਲੀ ਕਲਵਾਰ ਦਾ ਇਸਤੇਮਾਲ ਨਹੀਂ ਕਰਨਾ ਉਹਦੇ ਖਰਾਬ ਆਦਮੀ ਜਦੋਂ ਜੰਗ ਲੜ ਲੜਦਾ ਕੁਝ ਵੀ ਹੋ ਗਿਆ ਸਰਕਾਰ ਵੀ ਕਹਿੰਦੀ ਹੈ ਜਦੋਂ ਆਪਾਂ ਫੜ ਲਿਆ ਕਾਬੂ ਕਰ ਲਿਆ ਫੇਰ ਜੋ ਜ਼ਖਮੀ ਹੋਇਆ ਉਹਦਾ ਇਲਾਜ ਕਰਨਾ ਫੇਰ ਤੁਚਣਾ ਹੈ मारना ਨਹੀਂ नहीं ਕੇ ਚੋ ਜਖਮੀ करके ਫੜਨਾ ही ਹੁੰਦਾ ਹੈ ਬਾਰਨਾ ਦਾ ਆਈਡੀਆ ਨਹੀਂ ਸੀਗਾ ਜਖਮੀ ਕਰ ਇਹ ਤਾਂ ਬਾਅਦ ਚ ਹੋ ਗਿਆ ਗੱਲਾਂ ਨਹੀਂ ਹੋਣੀਆਂ ਹੁਣ ਜਣੇ ਨਾ ਅੱਜ ਸਾਡੇ ਕੋਲ ਸਿੱਖਾਣੀਆਂ ਨੇ ਇਹ ਤਾਂ ਦੁਆ ਰੱਬ ਕਰ ਗਿਆ ਨਾ ਬੰਦੇ ਵਾਹਦਰਾ ਵਾਲਾ ਜਿਹੜੀ ਹੀਰਾਂ ਕਰਦੇ ਸੀ ਹਿੰਦੂ ਉਹ ਆਖਰ ਛੋਟੇ ਛੋਟੇ ਜਵਾਕੇ ਕਹਨ ਫੇ ਤੂੰ ਚੁੱਪ ਕਰ ਜਾ ਹਰੀਸਾਂ ਆ ਜੂਗਾ ਰਲੂਆ ਕੈ ਇਸੇ ਤੋਂ ਬੱਚਿਆਂ ਨੂੰ ਉਹ ਜ਼ਲਮ ਨਹੀਂ ਉਹ ਤਾਂ ਜ਼ਲਮ ਹੈ ਜ਼ਲਮ ਸਿੱਖ ਜ਼ਲਮ ਨਹੀਂ ਜ਼ਲਮ ਨਹੀਂ ਕਰਦਾ ਜ਼ੁਲਮ ਹੈ ਨਕਤੂ ਹੀ ਅਸੀਂ ਖਿਲਾਫ ਛੋਟੇ ਬੱਚੇ ਨੂੰ ਜਿਹੇ دہشت ਆਦਮੀ ਜ਼ਲਮ ਹੈ بڑے ਨੂੰ دہشت ਹੋਵੇ ਠੀਕ ਹੈ ਉਹ ਵੀ ਜਿਹੜਾ ਬੜਾ ਬਹੁਤਾ ڈاکੂ ਬੰਮ ਦੇਸ਼ਤ ਹੋਵੇ ਹੰਕਾਰ ਨੂੰ ਦੇਸ਼ਤ ਹੋਵੇ ਸ਼੍ਰੀ ਹੰਕਾਰ ਨੂੰ ਦੇਸ਼ਤ ਹੋਵੇ ਜੋ ਆਦਮੀ ਭਲਾਵਣ ਦੇ ਉਹ ਦੇਸ਼ਤ ਹੋਵੇ ਸਰਕਾਰ ਦੀ ਸਰਕਾਰ ਦੀ ਦੇਸ਼ਤ ਹੋਵੇ ਡਾਕੂ ਹੋਵੇ ਹੋਰੇ ਆਦੂ ਹੋਵੇ ਭਰੇ ਆਦੂ ਕੀ ਦੇਸ਼ਤ ਹੋਵੇ ਹਾਂਜੀ ਸੰਭ ਘਟ ਕਿਸਕੇ को करने हार सब कण तिसके ओ करने हार देखो है सब अंदर कणने हार भी करने हार वो चाहे का हुक्म का विरोध कर ले चाहे हुकुम उमन ले चाहे सखत बन जवे चाहे संत बन जवे जिरे तिसके आने उनके जो ब्रह्म आ रहे हैं रब वास है रब नहीं ਸਭ ਬ੍ਰਹਮ ਹੈ ਸਭ ਬ੍ਰਹਮ ਹੈ ਬ੍ਰਹਮ ਬਿਨ ਨਹੀਂ ਕੋਈ ਉਹੀ ਆਉਗੀ ਵੇ ਤਾਂ ਬ੍ਰਿਸ਼ੀ ਅਸ਼ਪਦੀ ਦੀ ਕਰਨਾ ਹਾਂਦਾ ਜੀਵੇ ਆ ਜੀਵੇ ਉਹ ਤਾਂ ਕਰਾਉਣ ਵਾਲਾ ਹੈ ਹਾਂ ਕਹਿੰਦੇ ਆ ਕਰਾਉਣਾ ਸਰੀਰ ਤੇ ਕਰਾਉਣਾ ਉਹ ਉਹ ਨਹੀਂ ਕਰਾਉਣ ਵਾਲਾ ਹੈਗਾ ਆਪੋ ਨੂੰ ਨਹੀਂ ਕਰਾਉਣ ਦੇ ਰੱਖਦੇ ਉਹ ਤਾਂ ਜੱਜ ਛੋੜ ਦਿੰਦਾ ਜੇ ਜਿਆਦਾ ਚਾਹਣਾ ਮੈਂ ਕਰਨਾ ਉਹ ਕਹਿੰਦਾ ਵੀ ਕਲੋ ਚੁੱਪ ਕਰ ਜਾ ਉਦੀ ਚੁੱਪ ਰਹਦੀ ਹੁੰਦੀ ਹੈ ਫਰੋਦ ਨਹੀਂ ਕਰਦਾ ਜਦੋਂ ਇਹ ਘਰੋਂ ਹੁੰਦਾ ਉਹ ਇਹਦਾ ਫਰੋਦ ਨਹੀਂ ਕਰਦਾ ਬਸ ਬਚਾਉਣੇ ਵਾਲਾ ਨਹੀਂ ਵਰਦਾ ਉਹ ਜਦ ਮਾਰਨੇ ਵਾਲਾ ਇਹ ਹੁੰਦਾ ਨਾ ਬਚਾਉਣੇ ਵਾਲਾ ਜੇ ਤਾਂ ਉਹ ਆਪ ਖੜਾ ਹੋਈ ਫਿਰ ਫੇਟਾ ਨਹੀਂ ਮਾਰ ਸਕਦਾ ਪਰ ਜੇ ਉਹ ਬਚਾਉਣ ਵਾਲਾ ਹੋ ਜਵੇ ਹੱਥ ਦੇ ਰੱਖ ਕੇ ਡਾਕਟਰ ਬੜਾ ਭਾਈ ਇਹ ਇਥੋਂ ਦੀ ਸੀ ਕਹਿੰਦੇ ਆ بیمار ਚਾਹੁੰਦਾ ਵੀ ਇਹਨੂੰ ਮਾਰ ਦੇ ਤੇਰੇ ਫੋਨ ਵਿੱਚ ਆ ਗਿਆ ਮੈਨੂੰ ਮਾਰਨ ਉਹ ਗੁੱਸਾ ਹੋ ਜਾਂਦਾ ਬਸ ਤੂੰ ਆਪਣੇ ਜ਼ੁਬੇਦਾਰਾਂ ਉਹ ਕਹਦਾ ਜਰ ਕੋਈ ਨਹੀਂ ਬਾਲਂਦਾ ਆਪਾ ਚਪੋਜਦਾ ਨਹੀਂ ਹੁੰਦਾ ਇਹ ਤਾਂ ਬਾਧੂਰ ਨੂੰ ਹੁੰਦਾ ਇਹ ਕਹਦਾ ਠੀਕ ਆ ਆਪੇ ਚਪੋਜੋ ਇਹਦਾ ਕਰਨਾ ਕੋਈ ਨਹੀਂ ਮਸਲਦਾ ਕੰਮ ਕੋਈ ਹੋ ਕਰ ਜੇ ਆਪਣੇ ਚੋਂ ਠੀਕ ਸਭ ਕੱਢ ਉਹ ਕਰਨਾ ਹੈ ਹਾਰ ਸਦਾ ਸਦਾ ਤਿਸਕੋ ਨਮਸਕਾਰ ਸਦਾ ਸਦਾ ਤਿਸਕੋ ਨਮਸਕਾਰ ਸਭ ਘਟਦੇ ਸਕੇ ਉਹ ਕਰਨੇ ਹਾਰ ਜਿੰਨੇ ਸਦਾ ਸ ਮਤਲਬ ਸਭ ਘਟ ਜੀਦੇ ਨੇ ਉਹ ਕਰਨੇ ਹਰ ਵੀ ਹੈ ਉਹ ਕੋਣੇ ਮੂਲੇ ਹਟੇ ਮੂਰਾ ਰ ਸਦਾ ਸਦਾ ਤਿਸ ਕੋ ਨਿਸ਼ਤਾਰ ਕਰ ਉਹਦੇ ਗਈ ਨਿਸ਼ਤਾਰ ਕਰੀ ਚਾਹੀਦੀ ਜੀ ਜਦੋਂ ਬੁਰਾ ਕਰ ਹੁੰਦਾ ਜਦਮੀ ਨਿਸ਼ਤਾਰ ਕੀਤੀ ਹੈ ਕਹੀਂ ਬੁਰਾ ਕੀਤਾ ਮਤਲਬ ਮਰ ਬੰਦੀ ਨੇ ਬੁਰਾ ਕਰ ਕੀਤਾ ਉਹ ਚਾਹੁੰਦਾ ਸੀ ਅੰਦਰਲਾ ਬੁਰਾ ਕਰ ब्रह्म में ब्रह्म कहीं धोतले दे ने ब्रह्म में उधर खड़ा ब्रह्म में उधर खड़ा कोई पास में ब्रह्म खड़ा सब ब्रह्म में सब ब्रह्म में ब्रह्म में नहीं कोई ये आप बनया होया लो सरगोड दाबी ब्रह्म ही है हो ब्रह्म सरगोड बन गया इथे आके ਇੱਥੇ ਜੋ ਕੋਈ ਸਮਝ ਨਹੀਂ ਮੈਰਾ ਜਦੋਂ ਅਸੀਂ ਜਾਣੇ ਨਹੀਂ ਸਾਡੇ ਹਾਂ ਅਸੀਂ ਵਾਸਤੇ ਹੀ ਰੱਖਣਾ ਰੱਖ ਦੋ ਇਹ ਗੱਲਾਂ ਉਹਦਾ ਕੋਈ ਨਹੀਂ ਉਹਦੇ ਨਾਲ ਅਸੀਂ ਕਿਲੇ ਮੁਕਤੀ ਤੋਂ ਅਸੀਂ ਜਾਣਾ ਹੀ ਨਹੀਂ ਫੇਰ ਉਹਦਾ ਜਾਣਾ ਚਾਹੁੰਦੇ ਨਹੀਂ ਜਿਹੜਾ ਉਹ ਜਾਣਾ ਨਹੀਂ ਚਾਹੁੰਦਾ ਉਹ ਨੂੰ ਜਾਣਾ ਨਹੀਂ ਚਾਹੁੰਦਾ ਕਿਤੇ ਦਫਾ ਕੀ ਲਾਈਏ ਉਹ ਜਾਣਾ ਦੋ ਅਸੀਂ ਨਹੀਂ ਚਾਹੁੰਦੇ ਕੁਝ ਕੁ ਰਤਨ ਆਇਆ ਨਾ ਉਹ ਇੱਥੇ ਰਹਿਣਾ ਚਾਹੁੰਦਾ ਹੈ ਉਹਦਾ ਕੀ ਵਿਗਾੜਦਾ ਉਹਦਾ ਨਹੀਂ ਕੁਝ ਵਿਗਾੜਦਾ ਜਿਹੜੀ ਸਿੱਖਿਆ ਦਿੰਦੀ ਹੈ ਉਹ ਵਿਗਾੜਦਾ ਲੋਕਾਂ ਨੂੰ ਉਹਨਾਂ ਦਾ ਨਹੀਂ ਸਾਨੂੰ ਲੱਗਦੀ ਹੈ ਜਾਂ ਦੂਜਿਆਂ ਨੂੰ ਲੱਗਦਾ ਉਹ ਦਫਾ ਜੀ ਆ ਵੀ ਲੋਕਾਂ ਨੂੰ ਜਿਹੜਾ ਤੂੰ ਮੈਂ ਦਾ ਸਾਰਾ ਪ੍ਰਚਾਰ ਕਰਦਾ ਕੀ ਹੈ ਫਰੇਖ ਦੇ ਰੰਦ ਤੂੰ ਕੀ ਵੀ ਤਰ੍ਹਾਂ ਪ੍ਰਚਾਰ ਕਰਦਾ ਉਲਟ ਉਹ ਦਫਾ ਲੱਗੀ ਹੋਈ ਉਹ ਚਾਹਤਾ ਥੜਲੇ ਪਾਰਸਨਾ ਸੁਪਿਆ ਸਾਰੇ ਇਹਨੂੰ ਵਾਲੰਟੀ ਕੀ ਰੋੜਾ ਅੰਨਕ ਤਾਂ ਜाहिर ਹੋ ਗਿਆ ਲੋਕਾ ਮੇਰੇ ਗੁਰੂ ਬਣੇ ਹੋਤੇ ਬੈਠੇ ਨੇ ਹੱਥ ਵਾਤੇ ਨੇ ਕਹਿੰਦੇ ਨੇ ਹਾਂ ਮਾਰਾ ਅਸੀਂ ਗਲਤ ਪ੍ਰਚਾਰ ਕਰਦੇ ਤੇ ਸਭ ਨੇ ਰੱਖੇ ਨੇ ਉਹਨੂੰ ਇਹ ਕਹਨ ਘੋਬਾਂ ਨੇ ਵੀ ਹਾਂ ਉੱਪਰ ਚਾਰ ਕਰਦਾ ਚਾਰ ਚਾਰ ਠੀਕ ਹੈ ਤਾਂ ਜੜਾਏ ਦੀ ਫਰਦ ਦੀ ਮਾਰੇ ਨੂੰ ਬੰਦ ਹੋਣਾ ਜਿੰਦਰੇ ਬਧੀਆ ਹੈ ਬਧੀਆ ਬਣਾ ਉਹੀ ਕਹਿ ਰਿਹਾ ਦੀ ਬੈਸਟ ਫਾਰਮ ਆਫ ਰਿਵੈਂਜੂ ਇਹਨਾਂ ਨੂੰ ਮਾਫ ਕਰਦੋ ਸਭ ਤੋਂ ਬੜੀ ਇਹਨਾਂ ਨਾਲ ਹੀ ਹੈ ਤਾਂ ਗੁਰੂ ਘਰ ਨੇ ਕਹੇ ਕਹਿੰਦੇ ਜੇ ਸਾੜਾ ਹੈ ਤਾਂ ਇਸ ਮਟਲਾਏ ਉਹੀ ਗੱਲ ਲੈ ਸ਼ਰਨਾ ਹੈ ਤੇ ਇਸ ਘਟ ਲਾਏ 파ਸਨਾਥ ਨੇ ਕਹੀ 파ਸਨਾਥ ਨੂੰ ਵਿਸ਼ੰਧਰਨਾਥ ਨੇ ਇਹ ਕਰੂਰ ਹੈ ਉਹ ਤੇਰਾ ਦਰਗਾਹ ਦਾ ਤੂੰ ਆਪਣੀ ਬਰਦੀ ਨਾ ਨਹੀਂ ਵਾਰ ਸਕਦਾ ਉਹ 파ਸਨਾਥ ਨੂੰ ਕਿਹੜਾ ਦਾ ਗਿਆਨ ਸੀ ਪੂਰਾ 파ਸਨਾਥ ਤਾਂ ਗਿਆਨ ਜਦ ਤਰਨ ਵਾਲਾ ਆਹ ਗੱਲ ਕਹਿਦਾ ਹੈ ਜੇ ਬੰਦੇ ਕਾਦੇ ਮੱਧਾ ਛਾਦੇ ਵਾਲਾ ਜਿਹੜਾ ਗਿਆਨ ਹੁੰਦਾ ਹੈ ਉਹਦੇ ਗਿਆਨ ਵਾਲੀ ਸੀ ਉਹ ਪਖੰਡਵਾ ਅਧਿਕ ਪਖੰਡ ਸੀ ਕਹਿੰਦਾ ਵੀ ਯਾਦ ਅਸਲ ਗੱਲ ਆ ਹੈ ਕਰਦੇ ਕਿਉਂ ਉਹ ਪਹਿਲਾ ਮੱਧੇ ਦੀ ਸੀ ਫਿਰ ਉਹ ਤਕੜਾ ਸੀ ਜਿੱਤ ਲੈਂਦਾ ਸੀ ਕਾਬੂ ਕਰ ਲੈਂਦਾ ਸੀ ਸਦਾ ਸਦਾ ਨੂੰ ਨਮਸਕਾਰ ਹਰ ਹਰ ਪਿੰਡ ਸੰਤ ਹੋਣਾ ਪਿੰਡ ਪਿੰਡ ਚ ਰਾਜੇ ਜੀ ਹੋ ਅਜੇ ਹੁਣ ਸੰਤ ਰਹੇ ਨੇ ਸਾਰੇ ਇਕੱਠੇ ਗੱਲ ਇਹ ਕਰਦੇ ਪੰਜ ਲੱਖ ਕਹਦੇ ਬੀਉਣ ਗਿਆ ਸਦਾ ਛੋਟੇ ਛੋਟੇ ਸੰਤ ਪੰਜ ਲੱਖ ਕੋਈ ਜ਼ਿਆਦਾ ਨਹੀਂ ਹੋਣਾ ਉਹ ਗੱਲ ਸਦਾ ਸਦਾ ਸਦਾ ਸਦਾ ਤੇ ਨਮਸਕਾਰ ਇਸ ਕਰਕੇ ਜਦੋਂ ਬੁਰਾ ਤਾਂ ਵੀ ਮਨ ਬੁੱਧੀ ਉਹਨੂੰ ਬਿਛ ਤਾਂ ਵੀ ਉਹਨੂੰ ਨਮਸਕਾਰ ਹੁੰਦੀ ਹੈ ਜੇ RAM ਬੁਰਾ ਚਾਹੇ ਪਲਾਣ ਵਿਚਾਰ ਹੁੰੂ ਵੀ ਹੁੰਦੀ ਹੈ। ਰਾਵਲ ਭਲਾ ਚਾਹੇ ਬੁਰਾ ਨੋਟਸਾਰ ਹੁੰਦੀ ਵੀ ਹੁੰਦੀ ਹੈ। ਦੋਵੇਂ ਬਰਾਬਰ ਤੇ ਢਲੇ ਨੇ। ਰਾਵਲ ਤੇ ਢਲੇ ਨੇ ਦੋਏ। ਨੋਟਸਾਰ ਨਾਲ ਤਾਂ ਉਹਨੂੰ ਹੁੰਦੀ ਹੈ। ਉਹ ਬੁਰਿਆਂ ਵੀ ਨੋਟਸਾਰ ਹੁੰਦੀ ਨੇ ਇੱਥੇ ਭਲਿਆਂ ਨੂੰ ਘੱਟ ਹੋ ਗਿਆ ਬੁਰਿਆਂ ਨੂੰ ਵੱਧ ਹੁੰਦੀ ਹੈ। ਸਮਝ ਗਾਹਾਂ। ਨੂੰ ਨੋਟਸਾਰ ਨੇ ਇੱਥੇ। ਸਦਾ ਸਦਾ ਤਿਸ ਕੋ ਮੁਸ਼ਕਿਲ ਲਵਸਕਾਰ ਪ੍ਰਭ ਕੀ ਉਸਤਤੀ ਕਰੋ ਦਿਨ ਰਾਤ ਜਿਸੇ ਧਿਆਵੋ ਸਾਸ ਗਰਾਵ ਪਰ ਤੁਸੀਂ ਐ ਕਰਿਓ ਸਾਨੂੰ ਸਲਾਹ ਦਿੱਤੀ ਐ ਕੋ ਸਿੱਖਾ ਦੀ ਕਹਿੰਦਾ ਜੋ ਹੈ ਕਰਦੇ ਤੇ ਕਰੀ ਜਾਂਣਾ ਆਪਣਾ ਇਹ ਮਤਲਬ ਨਹੀਂ ਤੁਹਾਨੂੰ ਸੰਤ ਕਾ ਦੱਸਿਆ ਸੰਤ ਦੋਖੀ ਦੱਸਿਆ ਉਹਨੂੰ ਪੁੱਛਿਆ ਬਿਜਲੀ ਵਾਲੇ ਨੂੰ ਉਹ ਦੋਖੀ ਵੱਡ ਵਾਸਤੇ ਦੱਸਿਆ ਨਾ ਵੱਡ ਵਾਸਤੇ ਦੱਸਿਆ ਜੇ ਕੋਈ ਕਹੇ ਵੀ ਸੰਤ ਦਾ ਦੁੱਖੀ ਬਣਨਾ ਸਿਖਾਇਆ ਕੁਰਬਾਨੀ ਦੇ ਜਿਵੇਂ ਜਿਹੜਾ ਤਾਲੂnga ਤੇ ਸੇਖਾ ਤੁਸੀਂ ਕੀ ਲੈਣੀ ਹੈ ਸੰਤ ਦਾ ਦੁੱਖੀ ਬਣਨਾ ਸੰਤ ਦਾ ਬਣਨਾ ਬਣਜੋ ਬੇ ਕੋਬਿਡ ਉਹ ਵੀ ਗੈਰਪਰੰਪਰਾ ਜਿਹੇ ਰੂਪ ਦਿਖਾਏ ਨੇ ਸਾਰੇ ਇਹ ਵੀ ਸੰਤ ਦਾ ਦੁੱਖੀ ਹੈ ਪੜਨ ਤੇ ਕਿਹਾ ਜਾਂਦਾ ਬਿਨਾਂ ਅਸਗਾ ਸੰਤ ਕਿਹਾ ਜਾਂਦਾ ਵੱਡੀ ਆ ਕਮਣੇ ਕਮਤ ਤੋਂ ਲੱਗੇ ਇਹ ਵੀ ਕਹਿਤਾ ਹੂੰ ਤੁਸੀਂ ਕਫਟਾ ਲੱਗਣ ਇਹਨਾਂ ਨੂੰ ਜੋ ਕੁਝ ਕਹਿਤਾ ਉਹ ਸਿੱਖਿਆ ਹੀ ਹੈ ਉਹ ਸਿੱਖਿਆ ਕੋਈ ਹੈ ਜਿਹੜੀ ਸ਼ਰਾਬ ਜਾਣਦੇ ਸਭ ਕੁਝ ਨਹੀਂ ਉਹ ਨਹੀਂ ਇਹ ਲੋਕ ਆਹੀ ਨੁਦਿਆ ਕਰਦੇ ਸਵਾਲ ਇਸ ਤਰੀਕੇ ਨਾਲ ਕਰਨਾ ਛਾਤਰ ਦਿਮਾਗ ਰਹਿ ਕੁਈ ਅਸੀਂ ਇਹ ਤਾਂ ਜਾਣਦੇ ਨਹੀਂ ਤੁਸੀਂ ਕਿੱਥੇ ਬੋਲਦੇ ਹੋ ਤੁਹਾਡਾ ਫਰੇਸ ਤਾਂ ਨਹੀਂ ਪਤਾ ਜਿੱਥੇ ਅਸੀਂ ਸਾਡੀ ਤੁਹਾਡੇ ਤੇ ਅੱਖਾਂ ਸਭ ਕੁ ਕੱਟ ਕੇ ਬਾਹਰ ਰੱਖ ਲੈਣੇ ਤੁਹਾਡਾ ਘਟ ਘਟ ਕੇ ਅੰਦਰ ਕੀ ਜਾਣਦਾਲੀ ਗੱਲ ਥੋੜੀ ਬਾਹਰ ਰੱਖ ਲੈਣੇ ਪ੍ਰੇਸ਼ਤ ਕਰਕੇ ਪ੍ਰਭ ਦੀ ਹਜ਼ੂਰੀ ਕਰੋ ਦਿਨ ਰਾਤ ਪ੍ਰਭ ਦੀ ਹਜ਼ੂਰੀ ਕਰੋ ਦਿਨ ਰਾਤ ਪ੍ਰਭ ਦੀ ਹਜ਼ੂਰੀ ਉਹਦੇ ਵਿੱਚ ਭਾਈ ਗੋਦਾਸ ਜੀ ਸਾਡੇ ਕਿਹੜੇ ਪ੍ਰਭ ਦੀ ਹਜ਼ੂਰੀ ਹੋਈ ਉੱਥੇ ਉਹ ਲੈ ਲਈਏ ਛੜਤੀ ਸਮਝ ਆਉਣਾ ਨਹੀਂ ਕੋਈ ਇਹ ਉਹਨਾਂ ਲੋਕਾਂ ਦੀ ਗੱਲ ਹੈ ਉਹਨਾਂ ਦੀ ਅਸ਼ਪਦੀ ਹੈ ਜਿਹੜੇ ਅੱਜ ਆਏ ਖੜੇ ਨੇ ਆਖਰੀ ਪਤਾ ਹੁਣ ਹੋਰ ਹੋਰ ਤਰ੍ਹਾਂ ਦਾ ਹਾਂ ਅਸ਼ਪਦੀ ਦਾ ਚਾਹੀਦਾ ਸੌਦਾ ਪੂਰਾ ਨਹੀਂ ਸਿੱਧੀਆਂ ਗੱਲਾਂ ਨਹੀਂ ਹੋਣ ਇੱਥੇ ਯਾਰ ਮੈਂ ਤੇਰੀ ਆਪਾਂ ਪ੍ਰਭ ਕੀ ਉਸਤ ਕਰੋ ਦਿਨ ਰਾਤ ਕਰੋ ਦਿਨ ਰਾਤ ਉਹ ਤਾਂ ਇਹ ਗੱਲ ਤੇ ਖਾਦ ਹੁੰਦੇ ਨੇ ਐਸਾ ਕੰਮ ਮੇਰੇ ਨਾਲ ਨਹੀਂ ਕੀਤਾ ਕਰੋ ਅਪੇਵਹਾਰਾਜਾ ਨੇ ਕਿ ਪ੍ਰਭ ਕੀ ਉਸਤੀ ਦਿਨ ਰਾਤ ਕਰਦੇ ਨੇ ਜਾਂ ਨਹੀਂ ਕਰਦੇ ਹੁਣ ਪਤਾ ਲਗੂ ਵੀ ਉਹ ਗੁਰਦਾਨੇ ਕਿੱਥੇ ਘੁੰਮਦੀ ਹੈ ਤੁਸੀਂ ਉੱਤੇ ਖੜੇ ਬਾਰਖ ਜਿਹੜੀ ਅੱਡ ਫਾਰਟੋ ਖਾਂਦਾ ਹੈ ਬਾਹਰ ਤੇ ਖਲ ਕਾਲਾ ਹੁੰਦਾ ਵਿੱਚੋਂ ਚਿੱਟਾ ਹੁੰਦਾ ਉਹ ਜਿਹੜੇ ਚਿੱਟੇ ਵਾਲ ਹੁੰਦੇ ਨਾ ਇੱਕ ਕਹਾਵਤ ਹੈ ਕਿ ਉੱਤੋਂ ਤੋਂ ਕਾਲਾ ਹੁੰਦਾ ਬਾਹਰ ਵਿੱਚੋਂ ਅਦਗਰਾਸ ਨੂੰ ਜਰੂਰ ਧਿਆਨ ਰੱਖਣਾ ਆਪਣੇ ਮੂਰਤੇ ਧਿਆਨ ਰੱਖਣਾ ਸਾਹਸ ਗਰਾਸ ਅਸਰ ਧਿਆਨ ਰੱਖਣ ਦੇ ਸਾਹਸ ਰਾਸ਼ ਜਿਹੜਾ ਸਾਹ ਲੈਦਾ ਉਹੀ ਆ ਹਰ ਸਾਹ ਦੇ ਰੋ ਸਾਹ ਦਾ ਲੈਣ ਦਾ ਧਿਆਨ ਜਾਊਗਾ ਤਾਂ ਬਾਲਕ ਬਰ ਜਾਊਗਾ ਆਪਣੇ ਮੂਰਜਾ ਬਰ ਜਾਊਗਾ ਜੇ ਮੂਲ ਵੱਲ ਧਿਆਨ ਜਾਊਗਾ ਤਾਂ ਉਹਦਾ ਇਹ ਵੀ ਆਊਗਾ ਭਾਈ ਨੂੰ ਖਾਣਾ ਪੀਣਾ ਕੀ ਦਿੱਤਾ ਜੋ ਆਦੇਨੀ ਆਪਾਂ ਨੂੰ ਸਿਧਾਨਾ ਪੀਣਾ ਤਾਂ ਉਹ ਭੁੱਲਿਆ ਹੋਇਆ ਹੀ ਆ ਸਾਹਸ ਦੇ ਨਾਲ ਗਰਾਸ ਵੀ ਚਾਹੀਦਾ ਜੇ ਸਾਨੂੰ ਸਾਹਸ ਦਿੱਤਾ ਹੋਵੇ ਤੇ ਜ਼ਿੰਦਗੀ ਦਿੱਤਾ ਸਾਨੂੰ ਕੀ ਆ ਸਾਨੂੰ ਹਰ ਸਾਹ ਦੇ ਨਾਲ ਉਹਨੂੰ ਇੱਕ ਗਰਾਸ ਦੇਣ ਚਾਹੀਦਾ ਖਾਣ ਨੂੰ ਜਾਂਦਾ ਪਰ ਸਾਹ ਦੇ ਨਾਲ ਇੱਕ ਗਿਆਨ ਦਾ ਗਰਾਸ ਕੋ ਚਾਹੁੰਦਾ ਖਾਣਾ ਪਰ ਖਾਕ ਵਿੱਚ ਸੜਦਾ। ਹਾਂ। ਮਾਜ਼ਰਦਾ ਜਿਵੇਂ ਮਨੁੱਖੀ ਉਹਦਾ ਸਾਥ ਦੇਣ। ਹਾਂ। ਬਨੁਦੀ ਕਰ ਰਹਿਣ ਅਦਰੋਂ ਦੇ ਕੋਲ। ਸਾਥ ਵਿੱਚ ਝਾਂ ਰੱਖਣ ਉਹਦੇ ਨਾਲ ਜੁੜ ਕੇ ਨਾਂ। ਫਿਰ ਉਹ ਆਪਣੇ ਗਲਾਸ ਦੀ ਗੱਲ। ਫਿਰ ਉਹ ਕਹਾਜਾ। ਫਿਰ ਉਹ ਆਪਣਾ ਚਿੱਤ ਦਰਦਾ ਰਹੇਗਾ। ਸ਼ਬਦ ਵਿਚਾਰ ਦੇ ਚਿੱਤ ਸੱਚੋ ਸਾਹਿਬੇ ਚਲਦਾ ਹੈ ਗਰਾਸ ਹੀ ਮਿਲਦਾ। ਕਿਆਦਾ ਸੀ ਕੁਰਬਾਨੀ ਵਿਚਾਰਾਂ ਗਿਆ ਅਰ ਸਾਹ ਨਾਲੇ ਤੁਹਾਨੂੰ ਇੱਕ ਗਰਾਸ ਕੋਈ ਗੱਲ ਨਹੀਂ ਬਣੂਗੀ। ਨਬੀ ਉਹ ਆਇਆ ਸੰਦੂਚਾ ਜੂ ਮਿਲਿਆ। ਉਹ ਆਇਆ ਜਦ ਇਹ ਨਾਲ ਤੁਸੀਂ ਕਿਹਾ ਵੀ ਸ਼ਬਦ ਵਿਚਾਰ ਦਿਓ ਕੁਝ ਨਹੀਂ ਮਿਲਣਾ ਆ ਇਕੱਠਾ ਗਣੀ ਵਖਰੇ ਜਿਵੇਂ ਤਗਵੀਰ ਕਹਿੰਦਾ ਵੀ ਬਾਹਰ ਭੇਜਿਆ ਇਕੱਠਾ ਹੀ ਦੋਤੜੇ ਕੁਝ ਖਜਾਨਾ ਰਹੀ ਰਹੀ ਮਨਗਰਾਜ਼ ਆ ਥੋੜਾ ਥੋੜਾ ਥੋੜਾ ਮਨ ਜਾਨ ਗਨ ਪਰਦਾ ਹੁੰਦਾ ਏ ਥੋੜਾ ਥੋੜਾ ਕਰਕੇ ਸਮੁੰਦਰ ਬਣ ਜਾਂਦਾ ਜੇ ਲੀਕ ਨਾ ਹੋਵੇ ਤੇ ਕਿਆ ਨਿਕਲ ਕੇ ਯਾਦ ਨਾ ਰਹੀ ਤੇ ਜੇ ਲੀਕ ਨਾ ਹੋਵੇ ਅੰਦਰ ਤੇ ਕਿਆ ਰਹੇਗਾ ਕਿ ਡ੍ਰੌਪ ਡ੍ਰੌਪ ਨਾਲ ਗਿਆਨ ਹੋ ਜਾਂਦਾ ਗਿਆਨ ਕਥਾ ਦਾ ਇਗਰਤ ਸਮਝ ਨਹੀਂ ਹੁੰਦਾ ਕਮਟਾਇ ਕਰ ਦੋ ਲੋਨ ਉੱਦ ਜਾਣ ਗੀਆਂ ਗ੍ਰਾਂਮਾ ਤਾਂ ਆਂ ਬੰਸ਼ੁ ਵਰਤੇ ਤੇ ਉਸ ਕਾ ਤੇ ਉਸ ਕਾ ਕੀ ਆ ਜੈਸਾ ਕਰੇ ਤੈਸਾ ਕੁਝ ਆ ਜੋ ਕੁਝ ਵਰਤਦਾ ਹੈ ਆ ਸਭ ਚ ਇਹਦਾ ਹੀ ਕੀਤਾ ਵਰਤਦਾ ਕੀ ਜਿਹੜਾ ਖੁੱਠੇ ਦਾ ਸਿਆਲਾ ਕਰਦਾ ਉਹ ਵੀ ਇਦਾਂ ਹੀ ਕਰਦਾ। ਸੰਦੇ ਦੇ ਪਾਸਿਆ ਰਹਿਣਾ ਕਰ ਲੈਂਦੇ ਉਹ ਛੁੱਟ ਦੇ ਦਿੰਦਾ। ਓਮ ਭੜੇ ਕਮਾਜ ਭੜੇ ਆਜੂ ਦਾ ਵਿਰੋਧ ਨਹੀਂ ਕਰਦਾ। ਸਭ ਕਿਸਦੇ ਪਿੱਛੇ ਗੱਲ ਸਭ ਕਿਸੇ ਜੀ ਬੁਰਾ ਬਲਾ ਵਿਚੇ ਆ ਗਿਆ। ਬੁਰਾ ਬਲਾ ਵਿਚੇ ਆ ਗਿਆ। ਸਭ ਕੁਝ ਬੁਰਾ ਬਲਾ ਵਿਚੇ ਆ ਗਿਆ। ਕੀ ਇਹ ਤਾਂ ਉਹ ਪਰਮੇਸ਼ਰ ਦਾ ਆ ਸਭ ਕੁਝ ਵਰਤੇ ਖੇਤਾ ਅਸੀਬਰੀਏ ਇਹ ਤਾਂ ਹੋ ਨਹੀਂ ਸਕਦਾ ਆਪਾਂ ਕਿ ਸਾਰੇ ਬੁਲਾ ਕੇ ਦੇਖ ਲੈਂਦੇ ਆ ਪਰਮੇਸ਼ਰ ਵਾਲੀ ਬੁਲਾ ਕੇ ਦੇਖਣ ਹੁੰਦੇ ਜਿਵੇਂ ਦੇਖਣ ਦੇ ਬੁਲਾ ਕੇ ਕੋਈ ਕਹੂਗਾ ਜੀ ਇਹ ਤਾਂ ਸੌਣ ਬੜੋੜ ਤੇ ਐਂ ਕਰਤੇ ਸਭ ਕੁਝ ਵਰਤੇ ਇਸ ਕਾ ਕੀਆ ਸਾਰਾ ਕੁਝ ਵਰਤੇ ਦਰਗਾ ਕੀਤਾ ਉਰ ਜੇਦਾ ਪ੍ਰਬਲਸ਼ਰ ਦਾ ਗਈਏ ਫੇਤਾ ਜੀ ਬਰੀਏ ਇਹ ਤਾਂ ਸਾਡੇ ਕੋਲ ਹੋਗਾ ਹੀ ਨਹੀਂ ਇਹ ਤਾਂ ਪ੍ਰਾਪਾਇਆ ਸੀ ਪ੍ਰਬਲਸ਼ਰ ਆਇਆ ਨਹੀਂ ਹੋਇਆ ਪਹਿਲਾਂ ਫਟੜ ਤੋਂ ਸ਼ੁਰੂ ਹੋਈ ਹੈ ਗੱਲ ਹੂੰ ਉਹ ਤੇ ਸਾਰੇ ਹਲੋ ਤੇ ਉਹ ਵਾਸੀ ਤੇ ਸਾਰੇ ਉਹਨਾਂ ਲੋਕ ਜਿਹੜੇ ਸਲੋ ਫਿਰ ਇਹ ਤਾਂ ਫਿਰ ਬ੍ਰਹਮਾ ਭੂਰੁਪ੍ਰਭ ਵੀ ਹੈ ਤੇ ਕੋਈ ਇਹ ਬ੍ਰਹਮਾ ਜੋ ਪੂਰਨ ਬ੍ਰह्म ਨਹੀਂ ਆਇਆ ਹੈ ਜੇ ਪੂਰਨ ਬ੍ਰह्म ਹੁੰਦਾ ਤੇ ਪ੍ਰਭੂ ਹੋਤੋ ਕਈ ਵਾਰ ਮੈਂ ਕਿਹਾ ਤੁਸੀਂ ਕਿ ਆਂ ਨਹੀਂ ਦੱਸਦਾ ਹੈ ਤੇ ਆਂ ਦੱਸਦਾ ਹੋ ਤੇ ਲੋਕਾਂ ਤਾਂ ਕਿਉਂ ਨਹੀਂ ਦੱਸਦਾ ਸਮਝ ਨਹੀਂ ਆ ਰਹੀ ਪ੍ਰਭੂ ਆ ਪ੍ਰਾਪਤਿ ਫਰਕ ਨਹੀਂ ਸਮਝ ਆਇਆ ਮੈਂ ਕਈ ਵਾਰ ਕਹਿੰਦਾ ਸ਼ਾਇਦ ਕੋਈ ਮੋੜ ਇਹ ਜਹ ਨਹੀਂ ਆਇਆ ਜਿੱਥੋਂ ਗਾਹੇ ਖਾਣੇ ਚ ਵਹਿ ਜਾਂਦੀ ਹੈ ਮੋੜ ਹੁੰਦਾ ਉੱਥੋਂ ਫਿਰ ਖਾਣੇ ਚ ਜਾਂਦੀ ਹੈ ਗੱਲ ਬਿਲਕੁਲ ਹੁਣ ਇਸ ਦਾ ਕੀ ਆ ਜਿਹੜਾ ਇੱਕ ਹੈ ਉਹ ਫੂਲ ਬ੍ਰह्म ਉਹ ਪਾਪ ਤਾਂ ਕਰ ਨਹੀਂ ਸਕਦਾ ਹੈ ਅਰੇ ਉਹ ਤਾਂ ਕੁਝ ਵੀ ਨਹੀਂ ਕਰਦਾ ਕਿਲਾ ਜਾਂਦਾ ਕਿਲਾ ਹੁੰਦਾ ਤਾਂ ਕਰਦਾ ਹੀ ਨਹੀਂ ਕੁਝ ਫੂਲ ਬ੍ਰह्म ਆਸਦਾ ਹੀ ਦੇਤਾ ਦੀ ਕੋਈ ਜੀ ਵੀ ਹੈ ਇਹ ਪੂਰਨ ਵੀ ਹੋਇਆ ਹੋਇਆ ਪੂਰਨ ਨਹੀਂ ਬੰਦਾ ਸੱਚ ਦੀ ਗੱਲ ਕਰਦੇ ਆਪਾਂ ਹੂੰ ਗੁਰਮੁਖੀ ਉਹ ਦੁਰਮਤ ਕਹਦਾ ਸਰਪੰਡੀ ਖਾਂਦਾ ਹੈ ਤਾਂ ਬ੍ਰਹਮ ਉਹ ਦੁਰਮਤ ਕਹਦਾ ਸਰਪੰਡੀ ਖਾਂਦਾ ਉਦੋਂ ਹੈ ਕੋਈ ਕੋਣ ਆਉਂਦਾ ਬ੍ਰੋਸ ਕਰ ਲੈ ਮੋਂ ਬੰਨਾਵੇਂ ਨਾਲ ਬ੍ਰੋਸ ਉਹ ਜਦੋਂ ਇਹ ਜਿਹੜੀ ਸਾਰਾ ਅੰਸਰ ਹੈ ਇਹ ਇਹ ਬੁਰਾਈ ਕਰਦਾ ਧੁਰ ਹਕਮ ਨਾਲ ਸਾਰੇ ਅਵਰਾਦ ਇਹ ਟੋਲਾ ਕਰ ਏ ਟੋਲੇ ਦੇ ਚੇਲੇ ਆਏ ਢੋਲਾ ਇਹ ਢੋਲਾ ਅਪਰਾਧ ਤੇ ਹਟਾਉਂਦਾ ਨਹੀਂ ਹੈ ਲੋਕ ਤੇ ਵੀ ਹਟਾਉਂਦਾ ਉਹ ਤੇ ਵੀ ਨਹੀਂ ਹਟਾਉਂਦਾ ਅਰਦਾਸਾਂ ਕਰਦਾ ਮਨੋ ਨੂੰ ਕਹਿੰਦਾ ਪੂਰੀਆਂ ਕਰੋ ਇਹ ਢੋਲਾ ਸਾਰੇ ਹੀ ਜਿਹੜਾ ਹੈਗਾ ਉਹ ਇਹਨਾਂ ਦੇ ਗੁਰੂ ਆਰੇ ਇਹ ਸਾਰਾ ਢੋਲਾ ਇਹ ਅਪਰਾਧੀ ਦੇ ਜਿਹੜੇ ਗੁਰਪਖਣੇ ਆ ਉਹ ਅਪਰਾਧੀ ਹੀ ਨਹੀਂ ਅਪਰਾਧ ਕਰਦੇ ਹੀ ਨਹੀਂ ਉਹ ਕੁਰੰਗਤਾ ਜੇ ਬਰਾਦ ਕਰਨ ਲੱਗੇ ਉਹਦੇ ਰੋਕ ਲੈਂਦਾ ਵੀ ਇਹ ਜੇ ਕਿਤੇ ਉਹ ਹੋ ਵੀ ਜਾਵੇ ਗੁੱਸੇ ਚ ਆ ਕੇ ਕਿਸੇ ਤਰੀਕੇ ਨਾਲ ਆਇਆ ਵੀ ਉਹਦਾ ਰੋਹਤਾ ਤੇ ਹੋਰ ਹੁੰਦਾ ਜੀਨੇ ਸਾਖੀ ਆਈ ਆ ਜੋਗਿਆੜੀ ਸਾਖੀ ਆ ਹੋਰ ਕਈ ਚੀਜ਼ਾਂ ਨੇ ਇਹਨਾਂ ਦਾ ਇਹਨਾਂ ਵੱਲ ਤਾਂ ਭੂਰੇ ਹੋ ਜਾਂਦਾ ਇਹਨਾਂ ਨੂੰ ਭੂਰਾਂ ਨੇ ਪਤਾ ਨਹੀਂ ਕਿੱਥਾਂ ਦੇ ਦਿਮਾਗ ਚ ਉਲਟੀ ਸੋਚ ਰਿਆਂ ਨੂੰ ਹਟਾ ਕਲੰਕਲਨ ਰੋਲ ਵਿੱਚ ਅਸਾਂ ਕੜੇ ਹੁੰਦੇ ਸੀ ਇੱਕ ਵਾਰ ਦੇਖਿਆ ਨਾ ਘੁੰਮ ਕੇ ਫਟ ਗਿਆ ਬਹੁਤ ਦੇ ਲੱਗੂ ਰਕਵਾਂ ਦੀ ਬਜਾ ਜੀ بگੜ ਜਾਣੀ ਹੈ ਕੱਜੀ ਬਿੱਟੀ ਜੀ ਦੇਖ ਕੇ ਥਲੇ ਫਰੂਕ ਤਾਂ ਹੋਏ ਜਾਣਾ ਨਾ ਰੂਗ ਹੋਇਆ ਨਾ ਰੂਗ ਇੱਕ ਪਰ ਬਗਾੜਿਆ ਬੜਾ ਔਖਾ ਫਿਰ ਹੋਈ ਜਾਣਾ ਕੁਝ ਬਣਾਉਣਾ 8 2 ਡਾਲਰ ਨੂੰ ਨਹੀਂ ਹਟੋਗਾ ਉਹ ਜਿਹੜਾ ਤੁੰਗਿਆ ਪਾ ਰੋਦੀ ਨੇ ਗ੍ਰੋਥੀਆਂ ਜੋ ਕੋਤੇ ਬਲੇ ਜਿੰਨੇ ਚਾਹੀਦੇ ਉਦੋਂ ਨੇ ਸੰਤਾ ਜੋ ਬਣਦਾ ਹੀ ਨਹੀਂ ਇਹਨਾਂ ਕੱਚੇ ਹੁੰਦੇ ਨੇ ਉਹਨਾਂ ਨੂੰ ਪਕਾਉਣ ਵਾਲਾ ਕਿਹ ਜਾਂਦਾ ਕੱਚਿਆਂ ਨੂੰ ਨਹੀਂ ਉਹ ਬੁਰੇ ਰੱਬ ਕਰ ਦਿੰਦਾ ਨੇ ਨੇ ਰੱਖੇ ਨੇ ਮੇਰਾ ਆਪਣੀ ਤਾਂ ਪਜਾ ਕੇ ਰੱਖਾ ਉਹ ਬੜੇ ਐ ਧੂਏਟੜੇ ਚੜ੍ਹੇ ਬਣੇ ਨੇ ਉਹ ਨਾਲ ਜਿਹੜੇ ਦੇਦੇ ਨੇ ਗੁਰੂ ਬਣੇ ਪੈਰ ਉਹ ਗੁਰੂ ਵੀ ਬਣੇ ਹੋਏ ਨੇ ਉਹ ਜਿਹੜਾ ਪੀ ਲੈਂਦੇ ਨੇ ਕੁਝ ਫਿਰ ਪਿੱਛੋਂ ਪਛਤਾਉਂਦੇ ਰਹੇ ਐ ਕਰਕੇ ਬਹੁਤ ਕਿ ਸੁਣਨੇ ਨੇ ਕਿੜਾ ਥੋੜੀ ਐ ਪਬਲਿਕ ਫਿਰ ਕਈ ਹੁਣ ਜੂਨਾ ਕੱਟ ਕੇ ਆ ਰਹੇ ਨੇ ਦੋਵੇਂ ਦੋਵੇਂ ਵੀ ਆ ਰਹੇ ਜੇ ਤੱਕ ਉਹ ਹੀ ਆਦਮੀ ਕਾਦੀ ਪਹਿਲਾਂ ਜਿਹੜੇ ਗੱਗੀਆਂ ਕਰਕੇ ਗਏ ਹੋਏ ਨੇ ਜਾਂ ਜੇੜ ਕੱਟ ਕੇ ਉਹ ਸਿੱਖਿਆ ਵੀ ਦੇ ਰਹੇ ਪਾਈ ਰਹਿਣੋ ਪਰ ਆਪਣਾ ਦੇਣ ਲੱਗਦਾ ਦੁਨਿਆ ਕਾ ਉਹ ਧੰਮੇ ਆਦਮੀ ਵੀ ਪਹੁੰਚ ਗਿਆ ਰਹੇ ਨੇ ਹਾਂ ਕਰਕੇ ਵੀ ਆ ਰਹੇ ਨੇ ਕਿ ਕੁਛ ਨਹੀਂ ਪਤਾ ਥੱਲੇ ਕੀ ਹੈ ਆਪਾਂ ਅੰਦਾਜ਼ਾ ਤਾਂ ਲਾ ਸਕਦੇ ਹਾਂ ਹਾਂਜੀ तिथे ते आवो सांस ग्रास तिथे ते आवो सांस को किया जय जय करता हो जा बन जाता है वो जैसा ही हो बुराई करू बुरा बन जाऊंगा बुरे पास न जाऊं बुरा बन जाऊंगा भले पासे जाऊं बुरा बन जाऊंगा भलाई करू धर्म बुरे बुराई भी पला करूंगा तब भला ਇਹ ਰਜ਼ਦਾ ਹੀ ਤੋਰਾ ਸੋਚੂਗਾ ਕਰਤਾ ਫਿਰ ਰਜ਼ਦਾ ਨਹੀਂ ਤੋ ਸ਼ਕਦਾ ਰਜ਼ਦਾ ਕਰ ਕੋਈ ਉੱਠ ਨਹੀਂ ਸਕਦੇ ਉਹਦਾ ਹੋਣ ਵਾਲੇ ਕੰਮੇ ਕਰਾਉਂਦਾ ਹੈ ਤੇ ਜਿਹੜੇ ਹੋ ਜਾਣੇ ਨੇ ਉਹ ਕਰਾਉਂਦਾ ਇਹਦੇ ਉੱਤੇ ਘੱਬ ਔਰ ਇਹ ਕਾ ਜ਼ੀਰਦੇ ਕੁਛ ਹੈ ਪਰ ਇਹ ਚਲੋ ਇਹ ਮੰਨ ਲੈ ਜੇ ਕਰਦਾ ਉਹ ਮੰਨੂੜ ਹੀ ਹੋ ਜਾਂਦਾ ਜਾਂਦੀ ਹੈ ਨਾ ਜਦੋਂ ਜਦ ਲੱਗੇ ਆਣੇ ਪੈ ਕਰਤਾ ਉਹ ਤਾਂ ਵੈਸੇ ਤ ਆਪਣਾ ਘਰ ਵੀ ਜੋਂ ਆਹੀ ਸਿਸਟਮ ਜੀ ਇਹ ਕੋ ਬਹੁਤਾ ਉਖਾ ਨਹੀਂ ਹੈ ਬਹੁਤ ਜੀ ਉਹਨਾ ਖੇਲ ਆਪ ਹੀ ਕਰਨੇ ਹਾਰ ਆਪਣਾ ਖੇਲ ਆਪ ਕਰਨੇ ਹਾਰ ਖੇਲ ਆਪਣੇ ਇਹ ਬ੍ਰਹਮ ਦਾ ਖੇਲ ਹੈ ਆਪਣਾ ਆਪ ਹੀ ਹਰਦਾ ਚਾਹੇ ਪੈਰ ਘੋੜਾ ਮਾਲਵੇ ਚਾਹੇ ਆਪਣਾ ਸਵਾਲ ਲਵੇ ਆਪਣੇ ਅੱਤੀ ਆਪਣਾ ਆਪੇ ਹੀ ਕਾਜ ਸਭ ਕੁਝ ਇਹਦੇ ਤੇ ਖੜਾ ਉਹਦੇ ਜੇ ਦਖਲ ਕੀ ਹੈ ਦਖਲ ਸਿਰਫ ਇਹ ਹੈ ਇਹਦੇ ਬੈਡਰੂਮਿੰਟ ਵਾਸਤੇ ਦਖਲ ਹੋ ਪੈਂਦਾ ਉਹਨੂੰ ਦੇਣ ਵਾਸਤੇ ਗ੍ਰੋਥੀ ਦੇ ਘਰਾਂਲੇ ਫਿਰ ਦੇਖ ਬਹੁਤ ਨੇ ਉਲਟੇ ਪਾਸੇ ਲਾਉਣੇ ਵਾਲੇ ਬੇਸਤਰੇ ਇਹ ਉਹਦਾ ਕਾਹਨ ਮਾਇਆ ਤੇ ਕਬਜ਼ਾ ਕਰਨਾ ਹੁੰਦਾ ਉਹਨਾਂ ਨੇ ਆਇਆ ਜੀ ਸੂਲ ਤਾਂ ਹੱਥੇ ਨੇ ਲੋਕਾਂ ਤੋਂ ਉੱਧਰੋਂ ਨਿਭਾਇਨੇ ਬੋਲ ਜੁਤ ਪੈਸਾ ਚੌਧਰ ਐਸ ਕਰਕੇ ਸਾਰਾ ਇਹ ਖੇਲ ਵਗਾੜ ਰਿਹਾ ਪੁਣ ਆਪਣਾ ਵੀ ਅਧਗਰਾ ਕਰ ਰਹੇ ਨੇ ਪਬਲਿਕ ਦਾ ਵੀ ਅਧਗਰਾ ਕਰ ਰਹੇ ਨੇ ਸਭੇ ਸਭੇ ਸਿਰ ਆ ਜਿਹੜੇ ਇੱਥੇ ਹੁੰਦੇ ਨੇ ਜੋ ਵੀ ਕੁਝ ਹੁੰਦੇ ਨੇ ਇਥੇ ਤਕਤੀ ਦੇ ਬਰਤਦਾ ਰਹੇ ਨੇ ਜਿੰਨ ਕਰੋਪੀ ਕਹਿੰਦੇ ਆ ਸੀ ਕਰੋਪੀ ਵੀ ਆਪਣੀ ਹੋਜ਼ ਨੂੰ ਜਿਤੋਂ ਹੁੰਦਾ ਜੋ ਇੰਨਾ ਕੁ ਵੀ ਹੁੰਦੂ ਨੂੰ ਜਿੰਦਾਵੇਂ ਉਹਨੂੰ ਸਿਆਣ ਦੇ ਤਾਂ ਹੁਣ ਵੀ ਨਹੀਂ ਉਹਨੂੰ ਹਮਤ ਬਾਦ ਵੀ ਉਹ ਤੇ ਜਿਤਾਉਂਦਾ ਪਰ ਬਿਲਕੁਲ ਬਾਗੀ ਨਾ ਹੋ ਜਾਣ ਇਹ ਜੋ ਕਰਦਾ ਰਹੇ ਕੁਝ ਠੀਕ ਰਹੇ ਉਹ ਤਾਂ ਪੰਜ ਪਾਸਾ ਰਹੇ ਨੇ ਕਿ ਜਿਹੜਾ ਕਬੀਰ ਵੀ ਕਹ ਰਿਹਾ ਜੇ ਕੁੱਲ ਕੂਤਨ ਗਿਆਨ ਵਿਚਾਰੀ ਵਿਦਬਾ ਕਸਣਾ ਪਈ ਮੈਦਾਨੀ ਇਹ ਭਗਤ ਦੀ ਆਵਾਜ਼ ਹੈ ਭਗਤੀ ਇੱਛਾ ਦੀ ਆਵਾਜ਼ ਹੈ ਇਥੇ ਗਲਤ ਹੋ ਜਿਹੜੀ ਆ ਕੁਲਾਂ ਪਿੱਛੇ ਤੇ ਲੈ ਕੇ ਇੰਨੀਆਂ ਜਣੀਆਂ ਚਲੀਆਂ ਪਤਾ ਇੱਕ ਵੀ ਧਿਆਨ ਵਿਚਾਰੀ ਪੈਦਾ ਨਹੀਂ ਹੋਇਆ ਇਹਨਾਂ ਦਾ ਕੋਈ ਫਾਇਦਾ ਨਹੀਂ ਪਉਂਦਾ ਤੁਮ ਤੇ ਇਹਨਾਂ ਨੂੰ ਗਾਧਕ ਦੇ ਵੀ ਕਰ ਦਿੰਦਾ ਵਾ ਜਦ ਕੋਈ ਧਿਆਨ ਵਿਚਾਰੀ ਫੈਦਾ ਨਹੀਂ ਹੁੰਦਾ ਇੱਕ ਵਾਰ ਜਦ ਬੱਤ ਚਲਾਈ ਆ ਉਹਦੇ ਬਾਅਦੋਂ ਹਰ ਲੋਕ ਬੰਦਨ ਪੈ ਜਾਂਦੇ ਇਹ ਕਦੇ ਨਹੀਂ ਆਉਂਦੇ ਤੋਂ ਬਹੁਤ ਹੱਦ ਤੱਕ ਉਹ ਅਗਰੂ ਖਾਦੇ ਨੇ ਉਦੋਂ ਵੀ ਭੇੜੇ ਬੰਦੇ ਹੁੰਦੇ ਨੇ ਜਿਹੜੇ ਚੱਗੇ ਬੰਦੇ ਨੇ ਭੇੜੀਆਂ ਮਤਾਂ ਵਾਲੇ ਵੀ ਲਿੜੇ ਉਦੋਂ ਥੱਲੇ ਵੀ ਹੁੰਦੇ ਨੇ ਫਰਕ ਅਕਲਿਕਨ ਦਾ ਦੇ ਮੁਤਾਬਕ 3000 ਮਾਰ ਤੇ ਚੱਲ ਕੇ ਦੋਸਤਾਂ ਵਿੱਚ ਖਤਮ ਹੋ ਚੁੱਕੀ ਹੈ ਇਹ ਜਿਹੜੀ ਹੋ ਖੋਜ ਕੀਤੀ ਹੈ ਯੂਨੀਵਰਸਿਟੀ ਅੜਾ ਦੇ ਪਰਚਾ ਪੜਿਆ ਸੀ ਦਾਦਾ ਵੀ 3000 ਮਾਰ ਤੇ ਤਾਂ ਹੁਣ ਹੁਣ ਖਤਮ ਹੋ ਚੁੱਕੀ ਜੇ ਸਾਨੂੰ ਬਦੋਂ ਤੋਂ ਪਹਿਲਾਂ ਦਾ ਪਤਾ ਹੀ ਨਹੀਂ ਪੈਦਾ 50000 دی ہستی ہے سارے کو باقی فہ سمجھو یہ کر کے اتھے متاں اساں کہیں پیدا ہو جکدی ہے اساں پرکار دی پتی ہو جکدی ہے راجی اپنا کھیل آپ ہی کرنے ہار دوسرا کون کہے بیچارہ اپنا کھیل آپ آپ کرنے ہار ਆਪਣਾ ਖੇਡ ਆਪੇ ਕਰਨ ਵਾਲਾ ਦੂਆ ਇਹਨੂੰ ਕੀ ਦੱਸੇ ਇਹਦਾ ਵਿਚਾਰ ਕਰੇ ਦੂਆ ਨਹੀਂ ਇਹਦਾ ਵਿਚਾਰ ਕਰ ਸਕਦਾ ਇਹ ਆਪੇ ਆਪਣੀ ਬੁੱਲ ਨੂੰ ਅੰਦਰ ਵਿਚਾਰ ਕਰ ਸਕਦਾ ਵਿਚਾਰ ਤਾਂ ਕਰੂਗਾ ਆਪੇ ਸੁਣ ਕੇ ਦੂਆ ਨਾ ਬ੍ਰਹਮੀਨ ਹੋਂਦ ਦੇ ਵਿੱਚ ਵਾਲੇ ਤੇ ਨਹੀਂ ਨਿਨ ਬ੍ਰੰਤ ਨਹੀਂ ਬੱਸ ਬੈਠ ਕੇ ਕੁਝ ਤਾਂ ਦੇ ਵਿੱਚ ਵਿਚਾਰ ਕਰ ਸਕਦਾ ਹੈ ਜੇ ਬਾਣੀ ਠੀਕ ਹੈ ਤਾਂ ਮੰਨਣ ਜਾਂ ਫੋਨ ਫੈਦੋਗੇ ਉਹ ਬੰਦਾਂਗੇ ਕੋਈ ਡੱਕਾ ਲੈ ਫੇਰ ਵੀਰੇ ਕੋ ਜਾਣਾ ਲੈ ਫੇਰ ਵੀਰੇ ਮੰਨਣ ਦੇ ਨੁਕਸਾਨ ਨਹੀਂ ਹੈ ਕੋਈ ਫਾਇਦਾ ਨਾ ਮੰਨਣ ਦੇ ਨੁਕਸਾਨ ਹੈ ਨੁਕਸਾਨ ਨਹੀਂ ਕੋਈ ਹੈ ਜਿਹੜੀ ਚੀਜ਼ ਨੂੰਸਾ ਫਾਇਦਾ ਹੋਵੇ ਨੁਕਸਾਨ ਨਾ ਹੋਵੇ ਦੇਖੋ ਇੱਕ ਫਾਇਦਾ ਹੁੰਦਾ ਨੁਕਸਾਨ ਕਰਕੇ ਇੱਕ ਹੁੰਦਾ ਥੋੜਾ ਨੁਕਸਾਨ ਕਰਕੇ ਫਾਇਦਾ ਕੁਝ ਨੁਕਸਾਨ ਕਰਕੇ ਫਾਇਦਾ ਆ ਬਹੁਤ ਨੁਕਸਾਨ ਕਰਕੇ ਫਾਇਦਾ ਕੁਝ ਨਾ ਕੁਝ ਨੁਕਸਾਨ ਕਰਕੇ ਫਾਇਦਾ ਇਹ ਬਿਲਕੁਲ ਨੁਕਸਾਨ ਬਿਨਾ ਫਾਇਦਾ ਕੋਈ ਅਜਿਹਾ ਰਿਕਾਰਡ ਨਹੀਂ ਸਾਡੇ ਕੋਲ ਕਿ ਉਹ ਸਾਥੀ ਨੇ ਕਿਹਾ ਹੋਵੇ ਕਿ ਉਹ ਸਾਥੀ ਨੂੰ ਕੋਈ ਇਤਰਾਜ਼ ਹੋਵੇ ਵੀ ਮੇਰਾ ਜਾਨ ਹੋਇਆ ਉਹ ਖੜਾ ਪੈਰਾ ਦਿੱਸੇ ਸਭ ਤੋਂ ਜ਼ਿਆਦਾ ਮੁਸਲ ਦਸਮ ਪਾਸ਼ਾ ਨਾ ਹੋਇਆ ਸੀ ਉਹਨਾਂ ਨੇ ਕਿਹਾ ਯਾਰ ਉਹਦਾ ਸਾਨੂੰ ਸੱਤਰ ਚੰਗਾ ਫਟ ਗੇੜਿਆਂ ਦਾ ਜਾਨ ਬੇਤਰ ਪਿਆਰੇ ਨੂੰ ਬਹੁਤ ਬੜੀ ਨਾਇ ਤਾਂ ਲੈ ਕੇ ਗਏ ਦੇ ਕੋਈ ਨੁਕਸਾਨ ਕਦੇ ਨਹੀਂ ਹੋਇਆ ਇਹਦੇ ਨਾਲ ਹੋਇਆ ਉਹ ਪਾਣਾ ਇਵੇਂ ਵਰਤਣ ਨੂੰ ਸੀ ਜਿਵੇਂ ਵਰਤਿਆ ਉਹ ਤਾਂ ਪਾੜ ਰਿਹਾ ਸੀ ਉਹਦਾ ਇਹਨਾਂ ਬਤਾਂ ਨੁਕਸਾਨ ਹੋ ਉਹ ਨੁਕਸਾਨ ਨਹੀਂ ਹੋਇਆ ਉਹਨਾਂ ਨੇ ਕਿਹਾ ਨਾਲ ਲੈ ਜਾਣਾ ਸੀ ਜੇ ਛੱਡ ਜਾਂਦੇ ਝਾਂਕੋਲੇ ਰਹਿਣੇ ਤੇ ਐਸੇ ਕੰਮ ਦਾ ਗੁਜ਼ਾਰੇ ਇਹਨੇ ਦਿੱਤੇ ਇਹਨਾਂ ਨੇ ਕੀ ਘਟ ਰਿਹਾ ਉਹ ਚੋਂ ਅੱਗੇ ਤਾਂ ਤਾਂ ਜਿਆਦਾ ਮਾਇਆ ਇਹਨਾਂ ਕੋਲ ਮਾਇਆ ਦੇ ਤੋ ਜਾੜਦੇ ਉਹਨਾਂ ਸੰਨੇ ਫਾਇਦਾ ਕੀਤਾ ਸੀ ਐ ਪ੍ਰੋਫੈਨ ਨੁਕਸਾਨ ਕੀਤਾ ਉਹ ਇਨਸਾਨ ਨੇ ਤਾਂ ਫਾਇਦਾ ਕੀਤਾ ਸੀ ਉਹ ਨੁਕਸਾਨ ਨੇ ਤਾਂ ਸਿੱਖੀ ਕੀਤੀ ਸੀ ਸਿੱਖੀ ਮਜ਼ਬੂਤ ਕੀਤੀ ਜੀ ਘਰ ਘਰ ਸਿੱਖੀ ਪਾਇਦਾ ਕਰਤੀ ਸੀ ਆ ਜਿਹੜਾ ਅੱਜ ਆਲਾ ਫਾਇਦਾ ਇਹਦੇ ਕਰ ਕਰ ਤੋਂ ਸਿੱਖੀ ਦਾ ਬੋਗਬਾਤ ਬੋਗਬਾਤ ਅਜੇ ਨੂੰ ਸੋਨਾ ਹੋਊਗਾ ਸਭ ਕੁਝ ਹੋਊਗਾ ਝੂਠ ਹੋਊਗਾ ਮਾਇਆ ਝੂਠੀ ਐ ਜਿੱਦੀ ਬੱਜੀ ਹੋਵੇ ਪਰ ਸੱਚ ਹੈ ਜੀ ਆਜ ਸੱਚ ਜੁਗਤ ਹੋ ਤਾਂ ਹੈ ਵੀ ਸਤਜਾਨ ਨੂੰ ਜਵਾਬ ਦੇਣਾ ਰਿਸ਼ਤਾ ਤੋੜ ਲਿਆ ਤਾਂ ਸਪਾ ਜਾਗਾ ਤੁਦਮੇ ਰੋਗ ਹੋ ਜਾਇਨਾ ਉਹ ਇਹ ਉਦੋਂ ਉਲਟ ਖੜੇ ਨੇ ਅੱਜ ਕੋਈ ਹੈ ਸਭ ਕੁਝ ਹਾਂਜੀ ਜਿਸਨੂੰ ਕਿਰਪਾ ਕਰੇ ਜਿਸ ਆਪਨ ਦੇ ਵਡਭਾਗੀ ਨਾਨਕ ਜਨ ਸੋ ਜਿਸ ਨੂੰ ਕਰੇ ਦੇਖੋ ਇਹ ਗੱਲ ਕਿਉਂ ਬਹੀ ਆ ਵੀ ਬੰਤੀ ਆ ਇਹ ਕਾਤੇ ਆਈ ਗੱਲ ਆ ਜਿਹੜੇ ਸ਼੍ਰੀਖ ਖੜੇ ਨੇ ਆ ਐਂਡ ਦੀ ਗੱਲ ਆ ਗਈ ਕਰੇ ਉਹ ਭਾਈ ਅਸੀਂ ਕਿਹੜਾ ਟੱਕੇ ਨਾਲ ਲੈ ਲਿਆ ਨਾਮ ਜੀ ਤੇ ਉਹ ਕਿਰਪਾ ਕਰਦਾ ਨਾ ਉਹ ਨੂੰ ਦੇਦਾ ਸਾਨੂੰ ਕਹਦੇ ਤੁਸੀਂ ਬਗਰ ਪਏ ਹੋ ਸਾਡੀ ਤੇ ਤੁਸੀਂ ਲੈ ਲਓ ਅਸੀਂ ਟੱਕੇ ਨਾਲ ਲੈ ਲਿਆ ਨਾਮ ਜਿਸ ਕਿਰਪਾ ਕਰੇ ਜਿਸ ਕਿਰਪਾ ਕਰੇ हां ए जरूर है नाम कांदा ना वो दान परभागी है जिन्नू दाण बट देता है पर नुसी ले लंदे थोनू हटाया किसे थोनू कि मुली विलेया बेंटला आया नहीं किसे बेंटला आया नहीं ਸਭੇ ਕੇ ਤੇਹਰ ਜੇ ਭਾਵੇਂ ਉਹਦੇ ਵੀ ਬਰਮਾ ਜਿਹੜਾ ਫੁੱਟੋ ਤੁਸੀਂ ਦੂਏ ਪਾਸੇ ਲੱਗਿਆ ਤੁਹਾਡੇ ਤੇ ਵੀ ਕਿਰਪਾ ਹੋ ਜਾਂਦੀ ਹੋ ਸਕਦੀ ਸੀ ਪਰ ਦੂਏ ਚਲੇ ਗਏ ਤੜੇ ਦੇ ਬਰੋੜਾਲੇ ਤੜੇ ਗਏ ਸ਼੍ਰੀ ਪਰਬਲ ਮਾਇਆ ਕਬੀਰ ਕਹਿੰਦਾ ਮਾਇਆ ਜਿਹੜੀ ਆ ਬਰੋਚ ਖੜੀ ਆਡੀ ਪਰਬਲ ਆਇਆ ਜਿੰਨੀ ਮਾਇਆ ਸੱਚ ਦੇ ਵਿਰੋਧ ਖੜੀ ਹੈ ਲਿਖਿਆ ਨਾਲੇ ਜੇ ਮਾਇਆ ਦੇ ਸਰਤੇ ਤੁਸੀਂ ਕੋ ਸਾਡਾ ਪ੍ਰਚਾਰ ਹੋ ਜੂ ਬਿਲਕੁਲ ਨਹੀਂ ਹੋ ਸਕਦਾ ਇਹ ਤਾਂ ਵਿਰੋਧ ਖੜੀ ਆ ਇਹਦੀ ਪੂਰੀ ਸ਼ਕਤੀ ਮਾਇਆ ਦੀ ਸੱਚ ਦੇ ਪ੍ਰਚਾਰ ਦੇ ਵਿਰੋਧ ਹੁੰਦੀ ਹੈ ਅਰ ਜੋ ਚੇ ਮਾਇਆ ਜੋ ਪ੍ਰਭਲ ਸ਼ਕਤੀ ਹੈ ਮਾਇਆ ਦੀ ਮਾਇਆ ਪ੍ਰਭਲ ਹੈ ਉਹਦਾ ਸਾਰੀ ਜਿੱਤੀ ਸ਼ਕਤੀ ਹੈ ਮਾਇਆ ਦੀ ਆਡੀ ਰਹੂਗੀ ਇਹਦੇ ਵਿਰੋਧ ਦੇ ਵਿੱਚ ਸੱਚ ਦੇ ਉਹ ਝੂਠਾ ਮਾਇਆ ਝੂਠੀ ਹੈ ਇਹ ਸੱਚ ਹੈ ਬਿਲਕੁਲ ਹੋਜੀ ਮਾਇਆ ਦੇ ਸੱਤੇ ਮੁਲਾਜ਼ਮਾਂ ਦੇ ਸੱਤੇ ਜੇ ਕੋਈ ਸਿੱਖੀ ਬਹਿ ਚੂਗੀ ਇਹ ਨਹੀਂ ਕਰ ਸਕਦੇ ਉਹਦਾ ਮਾਇਆ ਉਹ ਤਾਂ ਬਿੱਲੀ ਨੂੰ ਤੁਸੀਂ ਦੁੱਤੀ ਰੱਖੀ ਬਣਾ ਲਿਆ ਜਹੀਂ ਜੱਭ ਜੂਗਾ ਜਹੀਂ ਜ ਮਾਰ ਬਿੱਲੀ ਨੂੰ ਗਾਵਿਆਦ ਹੁੰਦਾ ਹੈ ਜਹੀਂ ਜ ਮੋੜੋ ਬੈ ਅਸੀਂ ਲੜਕਣਾ ਤੇ ਲੱਸੀ ਬਣਾਵਾਂਗੇ ਗਾਲੂ ਪੀਣ ਦੇ ਨਾਲ ਉਹਨੇ ਗੋਸ਼ਣੀ ਗਾਲਾਂਗੇ ਬਿੱਲੀ ਨੂੰ ਰੱਖੀ ਬਣਾਇਆ ਜਦ ਤੈਨੂੰ ਲੈ ਜਾਓਗੇ ਇਹਦੇ ਕੋਈ ਜੱਬ ਨਹੀਂ ਮਿਲਣਾ ਰੁਣਦਾ ਫਿਰ ਦੋਗੇ ਤੇ ਹਾਂ ਨੇ ਬੜਪਾਗੀ ਨਾਨਕ ਜਨ ਸੇ ਹਾਂ ਉਹ ਜਨ ਬੜਪਾਗੀ ਹੈ ਮਿਲ ਜਾਂਦਾ ਨਾਲ ਤਾਂ ਜਨ ਬੜਪਾਗੀ ਹੈ ਤੁਸੀਂ ਉਹ ਕਿਉਂ ਨਹੀਂ ਲਿਆ ਗੋਲ ਮੋਰ ਬਿਚ ਤੁਸੀਂ ਤਾਂ ਇਹ ਲੈ ਲੈਂਦੇ ਨਾਂ ਗੁਰਬਾਣੀ ਜਿਹੜੀ ਪ੍ਰਚਾਰ ਦੇ ਉਹ ਮਤਲਬ ਦੇਖੋ ਫਿਰ ਤੇ ਕੋਰ ਪੜੋ ਜਿਸ ਨੂੰ ਕਿਰਪਾ ਕਰੇ ਜਿਸ ਜਿਹਦੇ ਤੇ ਕਿਰਪਾ ਕਰਦਾ ਉਹ ਨੂੰ ਨਾਮ ਦਿੰਦਾ ਗੁਰਿਆਈ ਮੈਨੂੰ ਬਾਪ ਨੇ ਨਹੀਂ ਦਿੱਤੀ ਪਰਮੇਸ਼ਰ ਨੇ ਦਿੱਤੀ ਇਹ ਪਰਮੇਸ਼ਰ ਕਿਰਪਾ ਨਾ ਕਰਦਾ ਮੈਨੂੰ ਰੇਟ ਹੌਂ ਦੇ ਦਿੰਦਾ ਜਿਸ ਨੂੰ ਕਰਪਾ ਕਰੇ ਨਾਮ ਦੇ ਤੇ ਨਾਮ ਦੇ ਕੋਈ ਨਾਮ ਗੁਰੂ ਲੈ ਉਹ ਨਾਮ ਨਾਮ ਆਪ ਮੰਗਦਾ ਹੈ ਤੁਸੀਂ ਕਹਿੰਦੇ ਨਾਮ ਦਿੱਤਾ ਹੈ ਉਹ ਤਾਂ ਆਪ ਮੰਗਦਾ ਨਾਨਕ ਮੰਗੇ ਨਾਮ ਕਰਪਾ ਕਰੇ ਉਹ ਤੇਣੀ ਵਾਲੀ ਗੱਲ ਕਰਦੇ ਹੋ ਉਹ ਗੁਰੂ ਆ ਗੁਰੂ ਕਰਦੇ ਹੋ ਉਹ ਕਹਿੰਦਾ ਸਾਦੇ ਦਾ ਗੁਰੂ ਸਦਾਇਆ ਗਿਆ ਦੀਸਾ ਕਿਸੇ ਉਹ ਮਾਰਗ ਪਾਪਾ ਤੁਸੀਂ ਕਹ ਰਹੇ ਹੋ ਗੁਰੂ ਆ ਬਾਪੜ ਗੁਰੂ ਹੈ ਜਗਤ ਇਹ ਤਾਂ ਠੀਕ ਹੈ ਬਾਣੀ ਕਹਿੰਦੀ ਹੈ ਕਿ ਗੁਰੂ ਹੈ ਜਗਤ ਜੇ ਤਾਂ ਗੁਰਮਾਨਤ ਗੁਰਦੇ ਵੀ ਬਾਪੜ ਬਣਾਉਣਾ ਤੁਸੀਂ ਸਤਿਗੁਰੂ ਮੰਨ ਲੈਨੇ ਸਤਿਗੁਰੂ ਬਾਬਾ ਬਣਾਓ ਸਤਿਗੁਰੂ ਬਾਬਾ ਬਣਾ ਲਓ ਬਾਪੜ ਬਣਾ ਨਾਲ ਉਹ ਨੇ ਆ ਜਿਹੜੇ ਸੰਤ ਕੇ ਡੰਡਕਤੇ ਹੋ ਨੇ ਨਾਨਕ ਗੁਰੂ ਬਣਾਉਣਾ ਨਾਨਕ ਕਿਉਂ ਟੁੱਲਿਆ ਸਾਰੇ ਜੀ